ये फूलते तुम बक्षण हम बक्षण हारे बक्षण हारे हम अपराधी सत बोलते तुम बक्षण ਗੁਰਕਾਲਸਾ ਜੀ ਦਾ ਸੰਦੀਪ ਸਿੰਘ ਦਾ ਪ੍ਰੋਗਰਾਮ ਅਨਹਦ ਬਣੀ ਜਿਸ ਮੱਪਤ ਜਿਉ ਆਪ ਜੀ ਕੋਲ ਆ ਕਰਨੀ ਚਮੰਗਾ ਗੁਰੂ ਜੀ ਬਖਸ਼ੀ ਇਸ ਨੰਬਰ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋਨ ਲਾ ਸਿੰ ਕੇ 960 ग्रैंड ओपनिंग हो रही है 16 मार्च को दोपहर 12 बजे अपने लाइफस्टाइल को ਤੇ জানੋ ਕਿ पाक्सवेल ਦਾ ਪ੍ਰਤੀਕ ਕਿਵੇਂ ਹੈ ਇੱਕ ਬੇਮਿਸਾਲ ਅਨੁਭਵ ਲਈ ਵਿਜ਼ਿਟ 120708878 ਆਪਣੇ ਪੇਸ਼ੈਂਟਸ ਦੀ ਸੇਫਟੀ ਨੂੰ ਮੁੱਖ ਰੱਖਦੇ ਹਾਂ ਡਾਕਟਰ ਬਾਹੀ ਜਨਰਲ ਐਨੈਸਥੀਸੀਆ ਅਜਹੀ ਫੈਸਿਲਿਟੀ ਤਹਿਤ ਦਿੰਦੇ ਹਨ ਜੋ ਕਿ ਹਰ ਸਾਲ ਕਾਲਜ ਆਫ ਡੈਂਟਲ ਸਰਜਨਸ ਦੁਆਰਾ ਸਰਟੀਫਾਈਡ ਹੁੰਦੀ ਹੈ ਸਾਡੀ ਕਲੀਨਿਕ ਚ ਕੰਮ ਕਰਨ ਵਾਲੇ ਸਾਰੇ ਐਨੈਸਥੀਸੀਓਲੋਜਿਸ ਐਂਡ ਰਜਿਸਟਰਡ ਨਰਸਸ ਬੋਰਡ ਸਰਟੀਫਾਈਡ ਹਨ ਅਤੇ ਲੋਕਲ ਹਸਪਤਾਲਸ ਤੋਂ ਹੀ ਹਨ ਜੇਕਰ ਤੁਸੀਂ ਦੰਦ ਕਢਵਾਉਣ ਤੋਂ ਡਰਦੇ ਹੋ ਅਤੇ ਚਾਹੁੰਦੇ ਹੋ ਕਿ ਤੁਹਾਡਾ ਦੰਦ ਨੀਂਦ ਵਿੱਚ ਹੀ ਕਢਿਆ ਜਾਵੇ ਤਾਂ ਇਹ ਯਕੀਨੀ ਬਣਾਓ ਕਿ ਉਹ ਫੈਸਿਲਿਟੀ ਤੁਹਾਡੀਆਂ ਐਨੈਸਥੀਸੀਆ ਜ਼ਰੂਰਤਾਂ ਲਈ ਸਰਟੀਫਾਈਡ ਅਤੇ ਸੁਰੱਖਿਅਤ ਹੋਵੇ ਡਾਕਟਰ ਬਾਹੀ ਕਈ ਪ੍ਰੋਸੀਜਰਸ ਐਨੈਸਥ 070514 <laughs> Oy, main tuhanu pehchanda ਮਨ ਨਹੀਂ ਪਛਾਣੋਗੇ ਇਹ ਉਹ ਜੋ ਅਕਾਊਂਟਸ ਮੌਰਗੇਜਸ ਰਿਮਿਟੈਂਸਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ਆਓ ਸਥਾਨਕ ਡਰੱਗ ਵੇਚਣ ਵਾਲੇ ਸੀਨ ਬਾਰੇ ਜਾਣਦੇ ਹੋ ਜਾਂ ਕੋਈ ਨਜਾਇਜ਼ ਗਨਸ ਦੇ ਪਿੱਛੇ ਕਿਸ ਦਾ ਹੱਥ ਹੈ ਕਾਲ ਕਰੋ 18002228477 ਹਰ ਸਾਲ ਹਜ਼ਾਰਾਂ ਲੋਕ ਟਿਪਸ ਸਵੀਕਾਰ ਕਰਦੇ ਨੇ ਤੁਹਾਨੂੰ ਪੁਲਿਸ ਅਤੇ ਅਦਾਲਤ ਤੋਂ ਡਰਨ ਦੀ ਲੋੜ ਨਹੀਂ ਤੁਹਾਡਾ ਨਾਮ ਗੁਪਤ ਰੱਖਿਆ ਜਾਏਗਾ ਸਗੋਂ 5000 ਡਾਲਰ ਨਾਮ ਵੀ ਮਿਲੇਗਾ solvecrime.ca ਹੈਲੋ ਆਪਣਾ ਮੈਸੇਜ ਛੱਡੋ ਤਾਂ ਕਿ ਮੈਂ ਤੁਹਾਨੂੰ ਕਰ ਸਕਾਂ ਹੈਲੋ ਮੈਂ ਹਾਂ ਅਮ ਤੁਹਾਡਾ ਆਪਣਾ ਭਵਿਕ ਮੈਂ ਤੁਹਾਨੂੰ ਧੰਨਵਾਦ ਕਰਨ ਲਈ ਫੋਨ ਕੀਤਾ ਹੈ ਤੁਸੀਂ ਵੈਕਸੀਨ ਲਗਵਾਉਣ ਦੇ ਫੈਸਲੇ ਨਾਲ ਜੀਵਨ ਵਿੱਚ ਅੱਗੇ ਚੱਲ ਕੇ ਹੋਣ ਵਾਲੇ ਕਈ ਕੈਂਸਰਾਂ ਤੋਂ ਬਚਾਉਣ ਵਿੱਚ ਆਪਣੀ ਮਦਦ ਕੀਤੀ ਹੈ ਸੋ ਧੰਨਵਾਦ ਤੁਹਾਡੇ ਪਰਿਵਾਰ ਤੁਹਾਡਾ ਬਹੁਤ ਬਹੁਤ ਧੰਨਵਾਦ HPV वैक्सीन योग्य نوجوانਾਂ ਲਈ સુરક્ષિત, અસરકારક ਅਤੇ મફત છે. વધુ માહિતી માટે healthlinkbc.ca/hpv પર જાઓ. BC ਦੀ સરકાર તરફથી એક સ્નેહ. कल्गी तर दे शेर देखे धन कल्गी तर दे शेर देखे दुनिया ते मर्द दलेर देखे दुनिया ते ਦੇਖੇ दलेर देखे नहीं जालिम नु उंगली उठोन दे दे उठोन दे दे उठोन ਸੱਚ ਤੇ ਧਰਮ ਨਾਲ ਜੁੜੇ ਹੋਏ ਕਥਨੀ ਕਰਨੀ ਦੇ ਪੂਰੇ ਨੇ ਹਕ ਸੱਚ ਤੇ ਧਰਮ ਨਾਲ ਜੁੜੇ ਹੋਏ ਕਥਨੀ ਕਰਨੀ ਦੇ ਪੂਰੇ ਨੇ ਦਿਨਾਂ ਦੁਖੀਆਂ ਚ ਮਜ਼ਲੂਮਾਂ ਲਈ ਜਿੰਦ ਹੱਸ ਕੇ ਵਾਰੂ ਦੇ ਪੂਰੇ ਨੇ ਪਹਿਲੋਂ ਵਾਰ ਕਿਸੇ ਤੇ ਦਰਦੇ ਨਹੀਂ ਪਹਿਲਾ ਵਾਰ ਕਿਸੇ ਤੇ ਕਰਦੇ ਨਹੀਂ ਕਿਤੇ ਜ਼ਾਲਮ ਦੀ ਹਰਕਤੋਂ ਦਰਦੇ ਨਹੀਂ ਵੀਦਾ ਜ਼ਾਲਮ ਨੂੰ ਨਹੀਂ ਹੋਣ ਦਿੰਦੇ ਹੋਣ ਦਿੰਦੇ ਭੋਣ ਦਿੰਦੇ ਸਿਰ ਲੱਖ ਦਾ ਬੇਸ਼ੱਕ ਲੱਤ ਜਾਵੇ ਸਿੰਘ ਪੱਗ ਨੂੰ ਹੱਥ ਨਹੀਂ ਸ਼ਕਲਤ ਜਾਵੇ ਸਿੰਘ ਪੱਦੋਂ ਹੱਥ ਨਹੀਂ ਪਾਉਣ ਦਿੰਦੇ ਹੁੰਦੇ ਨੇ ਜਿਹੜੇ ਆਕੜਖਾਨ ਕਹੋਂਦੇ ਨੇ ਹੱਥ ਚੁੱਕਦੇ ਸੁਲਮ ਘਮੋਂਦੇ ਨੇ ਉਹਨੂੰ ਚੈਨ ਨਾਲ ਨਹੀਂ ਸੌਣ ਦਿੰਦੇ ਸੌਣ ਦਿੰਦੇ ਨਹੀਂ ਸੌਣ ਦਿੰਦੇ ਸਿਰ ਲੱਖ ਦਾ ਬੇਸ਼ੱਕ ਲੱਤ ਜਾਵੇ ਸਿੰਘ ਪੱਗ ਨੂੰ ਹੱਥ ਨਹੀਂ ਪਾਉਂਦੇ ਸਿਰ ਲੱਖ ਦਾ ਬੇਸ਼ੱਕ ਲੱਤ ਜਾ ਖੁਸ਼ ਦਿਸੇ ਖੁਸ਼ ਹਾਲ ਦਿਸੇ ਸਿੰਘ ਭਲਾ ਸਰਬੱਤ ਦਾ ਮੰਗਦੇ ਨੇ ਜਦ ਖੁਸ਼ ਦਿਸੇ ਖੁਸ਼ ਹਾਲ ਦਿਸੇ ਸਿੰਘ ਭਲਾ ਸਰਬੱਤ ਦਾ ਮੰਗਦੇ ਨੇ ਉਹ ਦੀ ਖੰਗ ਤੇ ਖੁਸ਼ੀ ਚੁੱਕ ਦਿੰਦੇ ਜਿਹੜੇ ਖਰ ਮਸਤੀ ਵਿੱਚ ਖੰਗਦੇ ਨੇ ਮੈਂ ਦੇਖੇ ਸਿੰਘ ਸਤਾਰੇ ਜੈ ਮੈਂ ਦੇਖੇ ਸਿੰਘ ਸਤਾਰੇ ਜੈ ਉਹ ਝੋਲ ਵੀ ਦੀਪੁਰ ਵਾਲੇ ਜੈ KYE 93.1 FM Vancouver ਆਪਿਆ ਜਾਣੇ ਜਾਂ ਵਾਪਿਆ ਜਾਣੇ ਜੇ ਸਰਕਾਰ ਤੁਹਾਡੇ ਗਲਚ ਗੁੱਠਾ ਦੇ ਕੇ ਤੁਹਾਡੇ ਤੋਂ ਟੈਕਸ ਵਸੂਲ ਕਰ ਸਕਦੀ ਹੈ ਤਾਂ ਤੁਸੀਂ ਆਪਣੇ ਪਰਿਵਾਰ ਦੇ ਮੈਂਬਰਸ ਨੂੰ ਆਪਣੇ ਦਿਲ ਦੇ ਟੁਕੜੇ ਆਪਣੇ ਜੀਵਨ ਸਾਥੀ ਨੂੰ ਕੈਨੇਡਾ ਕਿਉਂ ਨਹੀਂ ਬੁਲਾ ਸਕਦੇ ਕਿਸੇ ਵੀ ਤਰ੍ਹਾਂ ਦੇ ਫੈਮਲੀ ਸਪான்ਸਰਸ਼ਿਪ ਰਿਫਿਊਜ਼ਲ ਮਾਮਲਿਆਂ ਦੀ ਅਪੀਲਸ ਅਤੇ ਆਪਣੇ ਬੰਦੇ ਹੱਕਾਂ ਨੂੰ ਹਾਸਲ ਕਰਨ ਲਈ ਤੁਸੀਂ ਸਾਡੀ ਲਾ ਫਰਮ ਬ੍ਰਿਜ ਮੋਹਨ ਐਂਡ ਐਸੋਸੀਏਟਸ ਦੀ ਤਜਰਬੇਕਾਰ ਤੇ ਪ੍ਰਭਾਵਸ਼ਾਲੀ ਇਮੀਗ੍ਰੇਸ਼ਨ ਟੀਮ ਨੂੰ ਜਦ ਮਰਜ਼ੀ ਕੰਟੈਕਟ ਕਰ ਸਕਦੇ ਹੋ ਬਿਕੋਜ਼ ਵੀ ਆਰ ਓਨਲੀ ਅ ਫੋਨ ਕਾਲ ਕਾਲ 6045980988 6045980988 ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਧੰਨਵਾਦ ਸੁਣੋ ਮੇਰੀ ਤਬੀਅਾ ਠੀਕ ਨਹੀਂ ਹੈ ਤੁਸੀਂ ਕੋਰਨਰ ਵਾਲੇ ਸਟੋਰ ਤੋਂ ਸਬਜ਼ੀ ਤੇ ਗ੍ਰੋਸਰੀ ਲਿਆਓ ਕੋਰਨਰ ਸਟੋਰ ਤੋਂ ਮਹਿੰਗਾ ਮਿਲਣਾ ਮਿਲੂ ਮੈਂ ਵੀ ਚੱਲਦੀ ਹਾਂ ਤੇ ਤੇਰੀ ਤਬੀਅਤ ਠੀਕ ਹੋ ਗਈ ਹਾਂਜੀ ਡੇ ਟੂ ਡੇ ਹੈ ਹਰ ਕਰਦੀ ਪਸੰਦ ਹੋਲ سیل ਪ੍ਰਾਈਸਸ ਨਾਲੇ ਸਟੋਰ ਐਨਾ ਵੱਡਾ ਤੇ ਸਾਫ਼ ਸੁਥਰਾ ਕਿਤੇ ਹੋਰ ਜਾਣਦਾ ਜੀ ਨਾ ਕਰੇ ਡੇ ਟੂ ਡੇ ਦੀ ਕੁਆਲਿਟੀ ਪ੍ਰਾਈਸ ਨੂੰ ਕੋਈ ਮੈਚ ਨਹੀਂ ਕਰ ਸਕਦਾ ਡੇ ਟੂ ਡੇ ਹੋਲ سیل ਵਿਜ਼ਿਟ 7843128 ਸਟਰੀਟ ਸਰੀ अच्छा ओए होए ਤੁਹਾਡੀ ਕਾਰ ਕੋਈ ਫਾਈਨਾਂਸ ਜਾਂ ਰੀਫਾਈਨਾਂਸ ਨਹੀਂ ਕਰਦਾ ਤਾਂ ਫਿਰ ਸੁਣੋ ਹੀਰ ਮੋਟਰਸ ਦਾ اعلان ਗੱਡੀ ਭਾਵੇਂ ਲਈ ਹੋਵੇ ਯਾਰ ਦੋਸਤੋਂ ਭਾਵੇਂ ਮਾਸੜ ਜੀਜੇ ਚਾਚੇ ਤੋਂ ਹੀਰ ਮੋਟਰਸ ਵਾਲਿਆਂ ਦੀ ਇਹੀ ਤਾਂ ਹੈ ਗੱਲ ਮਸ਼ਹੂਰ ਕਹਿੰਦੇ ਫਾਈਨਾਂਸ ਪਹਿਲਾਂ ਕਹਿੰਦੇ ਆ ਕਰਨਾ ਹੋਵੇ ਹਾਲ ਤਾਂ ਸਿੱਧਾ ਹੀਰ ਮੋਟਰਸ ਅਜੀਤ ਹੀਰ ਕੋਲ ਜਾਓ ਫਾਈਨਾਂਸ 4.99% terms and conditions apply ਸੁਣਿਆ ਕਦੇ ਸਿਰਫ 10% ਹਾਂਜੀ 10% ਡਿਪੋਜ਼ਿਟ ਨਾਲ ਤੁਸੀਂ ਆਪਣਾ ਖੁਦ ਦਾ ਕਾਂਡੋ ਖਰੀਦ ਸਕਦੇ ਹੋ ਕੀ ਕਿਹਾ ਸਿਰਫ 10% ਨਾਲ yes yes canada the established builders colico sweetside At the bot coach visit juno3.com ਹੁਣ ਉਹ ਕੰਮ ਕਰਨ ਦਾ ਸਮਾਂ ਹੈ ਜੋ ਤੁਸੀਂ ਕਰਨਾ ਚਾਹੁੰਦੇ ਸੀ ਪਰ ਪੁੱਲੀ ਜਾ ਰਹੇ ਸੀ ਹਾਂ ਇਹ ਬਿਸ਼ੇ ਦੇ ਟੈਕਸ ਤੋਂ ਛੋਟ ਲੈਣ ਲਈ ਰਜਿਸਟਰ ਕਰਨ ਦਾ ਸਮਾਂ ਹੈ ਯਾਦ ਰੱਖਣਾ ਇਹ ਟੈਕਸ ਰੀਅਲ ਅਸਟੇਟ ਸੱਟੇਬਾਜ਼ਾਂ ਖਾਲੀ ਕਰਾਂ ਦੇ ਮਾਲਕਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਸੋ ਇਹ ਵੀ ਹੋ ਸਕਦਾ ਹੈ ਕਿ ਤੁਹਾਨੂੰ ਇਹ ਟੈਕਸ ਅਦਾ ਹੀ ਨਾ ਕਰਨਾ ਪਵੇ ਪਰ ਛੋਟ ਲੈਣ ਲਈ ਤੁਹਾਨੂੰ ਰਜਿਸਟਰ ਕਰਨਾ ਪਵੇਗਾ ਅਤੇ 31 ਮਾਰਚ ਤੱਕ ਇਸ ਦੀ ਜਾਣਕਾਰੀ ਲਈ gov.bc.ca/spectax the do ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਵੱਲੋਂ ਇੱਕ ਸੰਦੇਸ਼ BCAA ਦੇ ਨਾਲ ਇੱਕ ਪ੍ਰੋਸੈਸ ਯੋਗ ਆਟੋ ਰਿਪੇਅਰ ਅਨੁਭਵ ਪ੍ਰਾਪਤ ਕਰੋ ਕੈਨੇਡਾ ਦੇ ਸਭ ਤੋਂ ਪ੍ਰੋਸਿਮਨ ਬ੍ਰਾਂਡਸ ਵਿੱਚੋਂ ਇੱਕ ਮਤਲਬ ਹੈ ਕਿ ਅਸੀਂ ਇਸ ਠੀਕ ਕਰਾਂਗੇ ਭਾਵੇਂ ਤੁਸੀਂ BCAA ਮੈਂਬਰ ਹੋ ਜਾਂ ਨਹੀਂ ਤੁਹਾਨੂੰ ਬਿਹਤਰੀਨ ਸਰਵਿਸ ਹੀ ਮਿਲੇਗੀ ਲੋਕੇਟਿਡ ਇਨ ਗ੍ਰੈਂਡਵਿਊ ਬੁੱਕ ਕਰੋ ਓ ਯਾਰ ਤੂੰ ਅਜੇ ਤੱਕ ਬਿੰਡਸ਼ੀਲ ਠੀਕ ਨਹੀਂ ਕਰਵਾਈ ਭਰਾਵਾ ਮਹਿੰਗੀ ਬੜੀ ਐ ਜੀਆਈਸੀਬੀਸੀ ਤੋਂ ਕਰਾਉਣਾ ਤਾਂ ਵੀ ਡਿਡਕਟੇਬਲ ਤਾਂ ਦੇਣੇ ਹੀ ਪੈਣਗੇ ਉਹ ਮੈਂ ਚੈਪਰਪੇਰ ਦੀ ਗੱਲ ਕਰਦਾ ਇੰਨੀ ਛੋਟੀ ਰਿਪੇਅਰ ਲਈ ਬਿੰਡਸ਼ੀਰ ਰਿਪੇਅਰਸ ਕਿਉਂ ਕਰਾਉਣੀ ਆ ਆਈਸੀਬੀਸੀ ਫ੍ਰੀ ਫਿਕਸ ਕਰਦੀ ਆ ਏਬੀਸੀ ਆਟੋ ਐਂਡ ਵਿੰਡੋ ਗਲਾਸ ਰਿਪੇਅਰ ਲਿਮਟਿਡ ਤੇ ਜਾ ਕੋਈ ਡਿਡਕਟਰ ਨਹੀਂ ਦੇਣਾ ਪੈਣਾ ਤੇ ਸ਼ੀਸ਼ਾ ਪੂਰਾ ਨਵੇਂ ਵਰਗਾ ਬਣਾ ਦੇਣਗੇ ਕਾਰ ਜਾਂ ਟਰੱਕ ਦੇ ਗਲਾਸ ਰਿਪੇਅਰ ਅਤੇ ਬਦਲਣ ਦੇ ਨਾਲ ਨਾਲ ਏਬੀਸੀ ਆਟੋ ਐਂਡ ਗਲਾਸ ਲਿਮਟਿਡ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ Too too some conditions apply ਪੈਣ ਜੀ ਕੀ ਗੱਲ ਤੁਸੀਂ ਹਰਮੰਦੇ ਵਿਆਹ ਤੇ ਨਹੀਂ ਆਏ ਕੀ ਦੱਸਾਂ ਪੈਣ ਜੀ ਸੈਂਟਰ ਖੋਲ੍ਹ ਦਿੱਤਾ ਇੱਥੇ ਮੋਟਾਪੇ ਦਾ ਇਲਾਜ ਬਿਨਾਂ ਤਕਲੀਫ ਤੋਂ ਹੁੰਦਾ ਹੈ ਤੇ ਸਿਰਫ 2 ਦਿਨ ਹੀ ਹਸਪਤਾਲ 'ਚ ਰੁਕਣਾ ਪੈਂਦਾ ਹੈ ਅਪਾਇੰਟਮੈਂਟ ਲਈ ਕਾਲ ਕਰੋ ਜਾਂ WhatsApp ਕਰੋ 73411018917349110 891 ਕੀ ਤੁਹਾਨੂੰ ਕਿਰਾਏਦਾਰਾਂ ਨਾਲ ਕੋਈ ਸਮੱਸਿਆ ਹੈ ਕਿਰਾਇਆ ਨਾ ਦੇਣਾ ਪ੍ਰਾਪਰਟੀ ਖਰਾਬ ਕਰਨਾ ਜਾਂ ਕੋਈ ਖਤਰਨਾਕ ਗਤੀਵਿਧੀ ਕੀ ਤੁਹਾਨੂੰ ਕਿਰਾਏਦਾਰਾਂ ਪੰਜਾਬੀ ਹਿੰਦੀ ਭਾਸ਼ਾ ਲਈ ਪ੍ਰੈਸ to integrated civil enforcement to see sun rahe ho hergender singh show great afendi <coughs> Thank okay. you. एफएम सुनवा लेन द सब द स्वागत है गुड मॉर्निंग सुबह दे 7:39 मिनट होए ने ते आज 8 मार्च है 8 मार्च 2024 ते फ्राइडे आ गया है आज महाशिवरात्रि है इंटरनेशनल वुमेन्स डे है चमकीले दी बरसी है आज दे प्रोग्राम दे विच बहुत बिजी प्रोग्राम है और कई मेहमान साडे आ रहे हन तापमान 20 डिग्री सेल्सियस दे नजदीक है ते वत्त वत्त तापमान 7 डिग्री सेल्सियस हो जाएगा ਤੇ ਫਗਨ ਸਮਤ 555 ਤੇ ਸੂਰਜ ਸਵੇਰੇ 6:42 ਮਿੰਟ ਤੇ ਚੜਿਆ ਸ਼ਾਮ ਨੂੰ 6:03 ਮਿੰਟ ਤੇ ਅਸਤ ਹੋ ਜਾਏਗਾ ਹਲਕੀਆਂ ਕਣੀਆਂ ਪੈ ਕੇ ਹਟੀਆਂ ਨੇ ਕਿਤੇ ਕਿਤੇ ਬਾਰਿਸ਼ ਵਾਲੇ ਹੋ ਰਹੀ ਹੈ ਰੁਕ ਰੁਕ ਕੇ ਮੀਂਹ ਪੈਂਦਾ ਰਹੇਗਾ ਇਸ ਕਿਸਮ ਦਾ ਗਿਲਾ ਮੌਸਮ ਰਹਿਣਾ ਹੈ ਤੇ ਠੰਡ ਹੈ ਹਲੇ ਵੀ ਬੇਸ਼ੱਕ ਮਾਰਚ ਦਾ ਜਿਹੜਾ ਪਹਿਲਾ ਹਫਤਾ तकरीबन ਖਤਮ ਹੋਣ ਵਾਲਾ ਹੈ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਗਲਬਾਤ ਹੋਣ ਵਾਲੀ ਹੈ ਕਿ ਕ੍ਰੇਨ ਇਨਸੀਡੈਂਟਸ ਕਿੰਨੇ ਵਧ ਗਏ ਨੇ ਕ੍ਰੇਨ ਇਨਸੀਡੈਂਟਸ ਕਰਕੇ ਇੱਕ ਔਰਤ ਦੀ ਜਾਨ ਵੀ ਚਲੀ ਗਈ ਹੈ ਇਸ ਦੇ ਸਬੰਧ ਦੇ ਵਿੱਚ ਵਰਕセਫ ਬੀਸੀ ਵਾਲੇ ਕਿਸ ਤਰੀਕੇ ਨਾਲ ਚੌਕਸ ਹੋ ਰਹੇ ਹਨ ਅਤੇ ਕ੍ਰੇਨ ਜਿਹੜੀ ਕਿਵੇਂ ਸੈਟਅਪ ਕੀਤੀ ਜਾਂਦੀ ਹੈ ਇਸ ਦੇ ਉੱਤੇ ਹੁਣ ਸਖਤੀ ਹੋਵੇਗੀ ਅੱਜ ਸੁਜ਼ੈਨਾ ਪ੍ਰਪਕਸ ਆਰਡੀਨਲ ਗਲਬਾਤ ਕਰਨਗੇ ਇਸ ਸਬੰਧ ਦੇ ਵਿੱਚ ਤੇ ਚਲੰਤ ਮਾਮਲਿਆਂ ਦੇ ਵਿੱਚ ਸਰੀ ਮੋਰਲ ਹਸਪੀਟਲ ਦੇ ਵਿੱਚ ਕੱਲ ਹੈਲਥ ਮਿਨਿਸਟਰੀ ਡਾਇਰੈਕਟ ਆਇਸਨ ਉਹਨਾਂ ਨੇ ਕਈ ਐਲਾਨ ਕੀਤੇ ਨੇ ਕਿ ਦੁਖਭੰਜਨ ਕਿਡਨੀ ਵਾਰਡ ਜਿਹੜਾ ਰੈਡਸਿੰਦੀ ਫੰਡਿੰਗ ਦੇ ਨਾਲ ਸਥਾਪਿਤ ਕੀਤਾ ਗਿਆ ਸੀ ਔਰ ਉਸ ਦੇ ਵਿੱਚ ਉਹਨਾਂ ਨੇ ਹੁਣ 21 ਹੋਰ ਬੈੱਡ ਲਾ ਦਿੱਤੇ ਨੇ ਤੇ ਕੁੱਲ ਹੁਣ ਬੈੱਡਸ ਦੀ ਗਿਣਤੀ 60 ਯੂਨਿਟ ਹੋ ਗਏ ਨੇ ਇਸ ਸੰਬੰਧ ਵਿੱਚ ਇੱਕ ਰਿਪੋਰਟ ਦੇਣਗੇ ਜਿਹੜਾ ਦੁਖਭੰਜਨ ਕਿਡਨੀ ਵਾਰਡ ਸਰੀ ਮੋਰਲ ਹਸਪੀਟਲ ਦਾ ਇਸ ਤੋਂ ਬੇਨਾ ਅੱਜ ਹੋਰ ਗੱਲਬਾਤ ਹੋਣ ਵਾਲੀ ਹੈ ਪੰਜਾਬ ਦੀ ਖਬਰਸਾਰ ਦੇ ਵਿੱਚ ਕਾਫੀ ਗੱਲਾਂ ਨੇ ਜਿਹੜੀਆਂ ਟਹਿਣਾ ਜੀ ਅੱਜ ਲੈ ਕੇ ਆ ਰਹੇ ਹਨ ਤੁਹਾਨੂੰ ਪੰਜਾਬ ਲੈ ਚੱਲਾਂਗੇ ਕੁਝ ਦੇਰ ਲਈ ਅਤੇ ਅੱਜ ਸਾਡੇ ਸਟੂਡੀਓਸ ਦੇ ਵਿੱਚ ਪੂਜਾ ਪੁਟਾਨੀ ਸੁਪਨੀਤ ਚਾਵਲਾ ਤੇ ਡਾਕਟਰ ਗੁੰਜਨ ਗੁਪਤਾ ਆ ਰਹੇ ਹਨ ਅੱਜ ਇੱਕ ਵਿਸ਼ੇਸ਼ ਪ੍ਰੋਗਰਾਮ ਦੀ ਅਸੀਂ ਸ਼ੁਰੂਆਤ ਕਰ ਰਹੇ ਹਾਂ ਫਰੇਮ ਟੂ ਫੇਮ ਅਦ੍ਰੈਸਰ ਪੂਜਾ ਭਟਾਨੀ ਹੋਰ ਦਾ ਇੱਕ ਖਾਸ ਪ੍ਰੋਗਰਾਮ ਹੈ ਕਿ ਕਿਸ ਤਰੀਕੇ ਨਾਲ ਔਰਤਾਂ ਨੂੰ ਹੋਰ ਅਚੀਵਮੈਂਟਸ ਕਰਨ ਲਈ ਪ੍ਰੇਰਨਾ ਦਿੱਤੀ ਜਾਏ ਇਸ ਪ੍ਰੋਗਰਾਮ ਦੇ ਵਿੱਚ ਅੱਜ ਖੁਦ ਵੀ ਸ਼ਾਮਲ ਹੋਣਗੇ ਔਰ ਇੱਕ ਬੜਾ ਦਿਲਚਸਪ ਸੈਗਮੈਂਟ ਹੋਏਗਾ ਤੇ ਬਾਕੀ ਇੰਟਰਨੈਸ਼ਨਲ ਵਿਮਨਸ ਡੇ ਦੇ ਉੱਤੇ ਪਹਿਲਾਂ ਤਾਂ RBC ਦੇ ਰਾਇਲ ਬੈਂਕ ਆਫ ਕੈਨੇਡਾ ਦੇ ਰੀਜਨਲ ਵਾਈਸ ਪ੍ਰੈਜ਼ੀਡੈਂਟ ਨੇ ਦਿਵਿੰਦਰ ਗਿੱਲ ਜੀ ਉਹ ਗੱਲਬਾਤ ਕਰਨਗੇ ਅਤੇ ਪ੍ਰੋਗਰਾਮ ਦੇ ਅਖੀਰਲੇ ਹਿੱਸੇ ਦੇ ਵਿੱਚ ਮੀਟਾ ਗਿਲ ਅੱਜ ਜਿਹੜੇ ਕਿ ਫਾਊਂਡਿੰਗ ਪ੍ਰੈਜ਼ੀਡੈਂਟ ਨੇ ਗਲੋਬਲ ਵਿਲੇਜ ਦੇ ਉਹਨਾਂ ਨਾਲ ਗੱਲਬਾਤ ਹੋਏਗੀ ਅਤੇ ਉਹ ਲੇਖਾ ਜੋਖਾ ਕਰਨਗੇ ਔਰਤਨੀਆਂ ਸਮੱਸਿਆਵਾਂ ਪਿਛੋਕੜ ਤੋਂ ਪਿੱਠੂ ਤੋਂ ਚੱਲਦੇ ਆਉਂਿਆ ਸਾਡੀਆਂ ਜੜੀਆਂ ਹੁਣ ਦੀਆਂ ਅਚੀਵਮੈਂਟਸ ਨੇ ਇਸ ਦੇ ਵਿੱਚ ਵਕ-ਵਕ ਜਿਹੜੇ ਰੋਲ ਅਦਾ ਕੀਤੇ ਲੋਕਾਂ ਨੇ ਉਸ ਦੀ ਗੱਲਬਾਤ ਵੀ ਚੱਲੇਗੀ ਸਵਿਚੇ ਤੌਰ ਤੇ ਔਰਦੀ ਪੋਜੀਸ਼ਨ ਜਿਹੜੀ ਹੈ ਖਾਸ ਤੌਰ ਤੇ ਫਾਈਨੈਂਸ਼ੀਅਲ ਅਮ ਵਿਰਲ ਫੀਲਡ ਨੇ ਉਸ ਦੇ ਵਿੱਚ ਔਰਤਾਂ ਦੀ ਪ੍ਰਾਪਤੀ ਸਮਾਜਿਕ ਕਤੇ ਹੋਰ ਐਡਮਿਨਿਸਟ੍ਰੇਸ਼ਨ ਦੇ ਵਿੱਚ ਸਿਆਸਤ ਦੇ ਵਿੱਚ ਜਸਟਨ ਟਰੂਡਰਾਂ ਤੇ ਹੋਰ ਲੱਖ ਦੋਸ਼ ਲੱਗਦੇ ਰਹਿਣ ਅੱਜ ਉਹਨਾਂ ਨੇ ਇੰਟਰਨੈਸ਼ਨਲ ਔਮਨ ਦੇ ਦੇ ਉਤੇ ਔਰਤਾਂ ਦੇ ਨਾਂ ਸੁਨੇਹਾ ਦਿੰਦਿਆਂ ਆਇਆ ਕਈ ਗੱਲਾਂ ਕੀਤੀਆਂ ਵੀ ਨੇ ਤੇ ਇਹ ਵੀ ਕਿਹਾ ਕਿ 7 ਬਿਲੀਅਨ ਡਾਲਰ ਅਸੀਂ ਇਨਵੈਸਟ ਕਰ ਰਹੇ ਹਾਂ ਪਰ ਉਹਨਾਂ ਨੇ ਜਿਹੜੀ ਜੈਂਡਰ ਇਕਵਿਟੀ ਆ ਔਰ ਖਾਸ ਤੌਰ ਤੇ ਔਰਤਾਂ ਨੂੰ ਟੁਕ ਮਿਸਾਂ თან ਦਿੱਤੀ ਜਾਏ ਉਸ ਦੇ ਵਿੱਚ ਉਹਨਾਂ ਦੀ ਮੇਜਰ ਪ੍ਰਾਪਤੀ ਰਹੀ ਹੈ ਔਰ ਉਹਨਾਂ ਨੇ ਪਾ ਮੈਂ ਉਹਨਾਂ ਦੀ ਕੈਬਨਟ ਸੀ ਯਾ ਕਿਤੇ ਵੀ ਇਹ ਉਹਨਾਂ ਨੇ ਇੱਕ ਬੈਲੈਂਸ ਰੱਖਣ ਦੀ ਕੋਸ਼ਿਸ਼ ਕੀਤੀ ਅਤੇ ਔਰਤਾਂ ਨੂੰ ਤੱਕੇ ਬਰਾਬਰੀ ਦਿੱਤੀ ਜਾ ਸਕੀ ਇਨਕਲੂਸਿਵਿਟੀ ਦੇ ਸਬੰਧ ਵਿੱਚ ਜਸਟਨ ਪ੍ਰੂਡੋ ਹੋਣਾਂ ਦੀ ਕਾਫੀ ਕੰਟਰੀਬਿਊਸ਼ਨ ਰਹੇਗੀ ਇਸ ਤੋਂ ਬਿਨਾ ਹੋਰ ਚੋਣ ਮੰਗਿਤ ਸੰਗੀਤ ਤੇ ਕਈ ਦਿਲਚਸਪੀਆ ਨੇ ਪ੍ਰੋਗਰਾਮ ਦੇ ਵਿੱਚ ਸਟੇ ਟਿਊਨਡ ਸਭ ਤੋਂ ਪਹਿਲਾਂ ਮੈਂ ਖਬਰਾਂ ਦਾ ਅਪਡੇਟ ਦੇ ਦਿਆਂ ਕਿ ਇੱਕ ਤਾਂ ਜਿਹੜੀ ਸਭ ਤੋਂ ਵੱਡੀ ਹੈਲਥ케ਅਰ ਨਾਲ ਸੰਬੰਧਿਤ ਕਿ ਸਾਡਾ ਹੈਲਥ케ਅਰ ਕਿਵੇਂ ਨਿੱਗ ਰਿਹਾ ਹੈ ਕੈਮਲੂਸ ਦੇ ਹਸਪਤਾਲ ਦੇ ਵਿੱਚੋਂ ਕਲੀਅਰ ਵਾਟਰ ਦੀ ਇੱਕ 77 ਸਾਲਾਂ ਦੀ ਬਜ਼ੁਰਗ ਔਰਤ ਨੂੰ ਪਜਾਮੇ ਦੇ ਵਿੱਚ ਹੀ ਹਸਪਤਾਲੋਂ ਰਾਤ ਦੇ 9 ਵਜੇ ਡਿਸਚਾਰਜ ਕਰ ਦਿੱਤਾ ਗਿਆ ਆ ਕਿਹਾ ਗਿਆ ਤੂੰ ਘਰ ਚਲੀ ਜਾ ਜਦ ਕਿ ਆਪ ਕਲੀਅਰ ਵਾਟਰ ਤੋ ਆਈ ਸੀ ਤੇ 120 ਕਿਲੋਮੀਟਰ ਦੂਰ ਉਹਦਾ ਘਰ ਸੀ ਹਨੇਰੇ ਕਰਕੇ ਜਾਂ ਖੋਰਕੇ ਹੀ ਕਾਰਨਾ ਕਰਕੇ ਉਸੇ ਪਤੀਕਾਰ ਨਹੀਂ ਚਲਾ ਸਕਦੇ ਤੇ ਉਸ ਨੂੰ ਜਾਣ ਲਈ ਕੋਈ ਥਾਂ ਨਹੀਂ ਸੀ ਅਖੀਰ ਜਦੋਂ ਉਸ ਨੂੰ ਹਸਪਤਾਲ ਚੋਂ ਡਿਸਚਾਰਜ ਕਰਕੇ ਬਾਹਰ ਪੇਜ ਦਿੱਤਾ ਗਿਆ ਤਾਂ ਉਸ ਨੇ ਟੈਕਸੀ ਸੱਦੀ ਟੈਕਸੀ ਕਰਕੇ ਜਾਂ ਫੋਨ ਕਰਕੇ ਆਪਣੇ ਕਿਸੇ ਹੋਰ ਦੂਰ ਦੇ ਰਿਸ਼ਤੇਦਾਰੀ ਆਪਣੇ ਦੋਸਤ ਨੂੰ ਕਿਆ ਕਿ ਮੈਨੂੰ ਰਾਤ ਕੱਟਣ ਲਈ ਥਾਂ ਦਿੱਤੀ ਜਾਏ ਤੇ ਉਸ ਨੂੰ ਦਿਮਾਗ ਦੀ ਸੋਜਿਸ਼ ਦਾ ਰੋਗ ਹੈ اور ਉਸ ਨੂੰ ਜੈਨਸ ਹਰਟਸ ਦਾ ਨਾਮ ਬੇਹੋਸ਼ ਹੋ ਗਈ ਸੀ ਤੇ ਕਨਵਲਸ਼ਨਸ ਕਰਕੇ ਹਸਪਤਾਲ ਦਾਖਲ ਹੋਈ ਸੀ ਹੁਣ ਹੈਲਥ ਮਿਨਿਸਟਰੀ ਡੀਨ ਡਿੱਕਸ ਦਾ ਪਲ ਪੁੰਟੀ ਉਹ ਕਹਿੰਦੇ ਕਿ ਮੈਂ ਖੁਦ ਇਸ ਨੂੰ ਵੇਖਾਂਗਾ ਆਈ ਵਿਲ ਲੁੱਕ ਇਨਟੂ ਇਟ ਤੇ ਤੇ ਹਾਲੇ ਵੀ ਜਿਹੜਾ ਇੰਟੀਰੀਅਰ ਹੈਲਥ ਦਾ ਵੈਬਸਾਈਟ ਹੈ ਉਸ ਦੇ ਉੱਤੇ ਹਾਲੇ ਵੀ ਇਹੀ ਲਿਖਿਆ ਹੋਇਆ ਕਿ ਜਦੋਂ ਡਿਸਚਾਰਜ ਹੋ ਜਾਂਦਾ ਕੋਈ ਮਰੀਜ਼ ਤੇ ਘਰ ਪਹੁੰਚਣ ਦੀ ਜ਼ਿੰਮੇਵਾਰੀ ਮਰੀਜ਼ ਦੀ ਹੋਵੇਗੀ ਪਰ ਅੱਡ ਅੱਡ ਸਿਚੁਏਸ਼ਨਸ ਨੇ ਹੁਣ ਪਤਾ ਨਹੀਂ ਇਹ ਵੈਬਸਾਈਟ ਕਦੋਂ ਬਣਾਇਆ ਗਿਆ ਸੀ ਤੇ ਕਲੀਅਰ ਵਾਟਰ ਤੋਂ ਮਰੀਜ਼ ਕੈਮ ਭੇਜੇ ਜਾਂਦੇ ਨੇ ਔਰ ਕੈਮ ਤੋਂ ਘਰ ਵਾਪਸ ਜਾਣਾ 9:30 ਵਜੇ 77 ਸਾਲ ਦੀ ਔਰਤ ਲਈ ਕਿੰਨਾ ਮੁਸ਼ਕਲ ਹੋ ਸਕਦਾ ਹੈ ਜਿਨੂੰ ਕੇ ਦਿਮਾਗ ਦੇ ਸੋਜਿਸ਼ ਦਾ ਰੋਗ ਹੈ ਸੋ ਇਸ ਕਿਸਮ ਦੀਆਂ ਜਿਹੜੀਆਂ ਕਟਨਾਵਾਂ ਨੇ ਉਹ ਰੁਕ ਨਹੀਂ ਰਹੀਆਂ ਦੂਜੀ ਵੱਡੀ ਗੱਲ ਰੌਬਨਸਨ ਹਾਲੇ ਵੀ ਸਿਲਿਨਾ ਰੌਬਨਸਨ ਜਿਹੜੇ ਜੂ ਬੈਕਗਰਾਉਂਡ ਦੇ ਮਨਿਸਟਰ ਤੋਂ ਐਮਐਲਏ ਤੇ ਐਮਐਲਏ ਤੋਂ ਹੁਣ ਕਾਕਸ ਤੋਂ ਅਸਤੀਫਾ ਦੇ ਕੇ ਇੰਡੀਪੈਂਡੈਂਟ ਹੋ ਗਏ ਨੇ ਉਹਨਾਂ ਦੇ ਸਬੰਧ ਦੇ ਵਿੱਚ ਖਾਲਸਿਕ ਗੱਲਬਾਤ ਚੱਲ ਰਹੀ ਹੈ ਜਿਹੜੀ ਕਿ ਐਨਡੀਪੀ ਦੀ ਸਰਕਾਰ ਨੂੰ ਮੌਜੂਦਾ ਸਰਕਾਰ ਨੂੰ ਹੁਣ ਹੱਥ ਪੈਰਾਂ ਦੀ ਪਈ ਹੋਈ ਹੈ ਕਿਉਂਕਿ ਜੂਜ਼ ਕਮਿਊਨਿਟੀ ਬੜੀ ਸਟਰੋਂਗ ਕਮਿਊਨਿਟੀ ਆ ਔਰ ਜਿਸ ਤਰੀਕੇ ਨਾਲ ਰੌਬਨਸਨ ਛੱਡ ਕੇ ਗਏ ਨੇ ਤੇ ਇੱਕ ਚਿੱਠੀ ਪੰਜ ਸਫਿਆਂ ਦੀ ਲਿਖ ਗਏ ਨੇ ਜਿਹਦੇ ਵਿੱਚ ਉਹਨਾਂ ਨੇ ਅ ਕਈ ਉਹਨਾਂ ਦੇ ਜਿਹੜੇ ਐਮ ਐਲ ਏਜ਼ ਨੇ ਉਹਨਾਂ ਤੇ ਦੋਸ਼ ਲਾਏ ਹਨ ਸੋ ਉਹ ਦੋਸ਼ਾਂ ਦੀ ਰੋਸ਼ਨੀ ਦੇ ਵਿੱਚ ਪ੍ਰੀਮੀਅਰ ਦੇ ਸਤੀਫੇ ਦੀ ਮੰਗ ਕੀਤੀ ਗਈ ਹੈ ਜੌਨ ਰਸਟਡ ਵੱਲੋਂ ਅਤੇ ਇਸੇ ਸੰਬੰਧ ਦੇ ਵਿੱਚ ਅ ਜਿਹੜੇ ਕੈਵਨ ਫਾਲਕਨ ਨੇ ਉਹਨਾਂ ਨੇ ਕਿਹਾ ਕਿ ਪਬਲਿਕ ਇਨਕੁਆਇਰੀ ਕਰਵਾਈ ਜਾਏ ਅਤੇ ਪ੍ਰੀਮੀਅਰ ਕਹਿ ਰਹੇ ਆ ਕਿ ਅਸੀਂ ਇਸ ਦੇ ਬਾਰੇ ਦੇਖ ਰਹੇ ਹਾਂ ਵਿਚਾਰ ਕਰ ਰਹੇ ਹਾਂ ਅਸੀਂ ਵੀ ਹਰਟ ਹੋ ਰਹੇ ਹਾਂ ਐਨ ਡੀ ਪੀ ਵੀ ਹਰਟ ਹੋ ਰਹੀ ਹੈ ਪਹਿਲਾਂ ਗੱਲ ਇਹ ਚੱਲੀ ਸੀ ਕਿ ਸਿਲਿਨਾ ਰੌਬਨਸਨ ਹਲਟ ਹੋਈ ਹੋਈ ਹੈ ਇਸ ਕਰਕੇ ਸੋਨੇ ਗੱਲਾਂ ਕਰਦੀਏ ਪਰ ਹੁਣ ਉਹ ਕਹਿੰਦੇ ਕਿ ਐਨਡੀਪੀ ਵੀ ਹਲਟ ਹੈ ਪਬਲਿਕ ਇਨਕੁਆਰੀ ਤੇ ਲੱਗਦਾ ਨਹੀਂ ਕਿ ਹੋਵੇ ਕਿਉਂਕਿ ਪਬਲਿਕ ਇਨਕੁਆਰੀ ਦੇ ਨਾਲ ਬੋਥ ਸਾਰੀ ਹੋਰ ਕੈਨ ਆਫ ਵਰਮਸ ਕੋਲ ਵਾਲੀ ਗੱਲ ਨਿਕਲੇ ਉਹਨਾਂ ਦੀ ਸਰਕਾਰ ਨੇ ਪਬਲਿਕ ਇਨਕੁਆਰੀ ਤੇ ਕਰਾਉਣੀ ਨਹੀਂ ਲੇਕਿਨ ਉਹਨਾਂ ਨੇ ਕੀ ਕੀਤਾ ਇੱਕ ਹੋਰ ਗੇਮ ਖੇਢੀ ਹੈ ਜਿਹੜੀ ਕਿ ਆਮ ਜ਼ਰੂਰਤ ਤੇ ਭਾਰਤੀ ਪੋਲਿਟਿਕਸ ਚ ਹੋਇਆ ਕਰਦੀ ਹੈ ਸਿਆਸਦਾਨ तकरीबन तकरीबन 100 ਜੇ ਹੁੰਦੇ ਆ ਉਹਨਾਂ ਨੇ জর্জ ਹੇਮਨ ਨੂੰ ਪੱਤਰਕਾਰਾਂ ਸਾਹਮਣੇ ਪੇਸ਼ ਕੀਤਾ ਹੈ ਕਿਉਂਕਿ জর্জ ਹੇਮਨ ਵੀ ਜਿਊ ਨੇ ਜਿਊ ਬੈਕਗ੍ਰਾਉਂਡ ਦੇ ਨੇ ਔਰ ਉਹਨਾਂ ਨੇ ਜਾ ਕੇ ਕਿਹਾ ਮੈਨੂੰ ਤੇ ਕੋਈ ਤਕਲੀਫ ਨਹੀਂ ਆਈ ਕਦੇ ਮੇਰੇ ਨਾਲ ਤਾਂ ਕਿਸੇ ਨੇ ਕੋਈ ਵਿਤਕਰਾ ਨਹੀਂ ਕੀਤਾ ਮੇਰੇ ਨਾਲ ਤਾਂ ਸਾਰੇ ਜਣੇ ਖੜੇ ਨੇ ਮੈਂ ਵੀ ਜਿਊ ਆ ਸੋ ਉਹਨਾਂ ਨੇ ਜਿਹੜੀ ਰੌਬਨਸਨ ਦੇ ਦੋਸ਼ ਆ ਉਹਨਾਂ ਨੂੰ ਨਕਾਰਨ ਦੀ ਕੋਸ਼ਿਸ਼ ਕੀਤੀ ਹੈ ਸੋ ਉਹਨਾਂ ਨੇ ਕੋਰ ਜੂ ਲਬਲੇ ਆ ਤਾਂ ਕਿ ਅ ਜੂਸ ਦੇ ਸਬੰਧ ਵਿੱਚ ਉਹ ਇਸ ਤੋਂ ਦੀ ਸਟੇਟਮੈਂਟ ਇਸ਼ੂ ਕਰ ਸਕਣ ਤੇ ਐਨ ਡੀ ਪੀ ਨੂੰ ਜਾਂ ਮੌਜੂਦਾ ਸਰਕਾਰ ਨੂੰ ਜਾਂ ਜਿਹੜੇ 7 8 7 6 7 ਨੇ ਮੇਰੇ ਖਿਆਲਾ ਜਿਨ੍ਹਾਂ ਦੇ ਉੱਤੇ ਦੋਸ਼ ਲਾਏ ਨੇ ਜਿਨ੍ਹਾਂ ਦੇ ਵਿੱਚ ਮੇਬਲ ਐਲ ਨਾਰਥਨ ਵੀ ਹੋਂ ਹੈ ਤੇ ਨਿੱਕੀ ਸ਼ਰਮਾ ਜੀ ਦਾ ਨਾਮ ਹਾਂ ਜਗਰੂਪ ਸਿੰਘ ਬਰਾੜ ਦਾ ਵੀ ਜ਼ਿਕਰ ਕੀਤਾ ਗਿਆ ਉਸ ਦੇ ਵਿੱਚ ਉਸ ਚਿੱਠੀ ਚ ਹੋਰ ਵੀ ਕਈ ਨਾਮ ਨੇ ਜਿਹੜੇ ਉਹਨਾਂ ਨੇ ਦੱਸੇ ਨੇ ਤੇ ਮਿਨਿਸਟਰ ਵਾਈਟ ਹੈਡ ਦਾ ਵੀ ਨਾਮ ਹੈ ਸੋ ਇਹਨਾਂ ਦੇ ਉੱਤੇ ਉਹਨਾਂ ਨੇ ਦੋਸ਼ ਲਾਏ ਨੇ ਤੇ ਬਾਰ-ਬਾਰ ਇਹੀ ਗੱਲ ਕੀ ਆ ਕਿ ਇਹ ਬੁਸਦਿਲ ਨਹੀਂ ਮੇਰੇ ਨਾਲ ਖੜੇ ਨਹੀਂ ਸੋ ਇਹ ਇਸ ਚੁਟੀ ਨੇ ਹੋਂ ਵਿਪਤਾ ਪਾਈ ਹੋਈ ਆ ਪਰ ਦੇਖਦੇ ਆ ਅੱਜ ਪ੍ਰੀਮੀਅਰ ਦੀ ਜੂ ਕਮਿਊਨਿਟੀ ਨਾਲ ਇੱਕ ਮੀਟਿੰਗ ਆ ਪ੍ਰੀਮੀਅਰ ਡੇਵਿਡ ਈ ਵੀ ਜੂ ਕਮਿਊਨਿਟੀ ਨੂੰ ਮਿਲ ਰਹੇ ਨੇ ਇਹ ਮੀਟਿੰਗ ਇਸ ਕਰਕੇ ਨਹੀਂ ਰੱਖੀ ਗਈ ਕਿ ਇਸਲੀਨਾ ਰੌਬਨਸਨ ਅੱਜ ਕੱਲ ਛੱਡ ਗਏ ਸਨ ਸਗੋਂ ਪਰਸੋਂ ਛੱਡ ਗਏ ਸਨ ਸਗੋਂ ਇਸ ਕਰਕੇ ਰੱਖੀ ਗਈ ਆ ਕਿ ਇਹ ਪਹਿਲਾਂ ਇੱਕ ਉਹਨਾਂ ਦੀ ਪਲਾਨ ਸੀ ਕਾਫੀ ਦੇਰ ਪਹਿਲਾਂ ਸ케ਜੂਲ ਕੀਤੀ ਗਈ ਸੀ ਵੈਸੇ ਵੀ ਉਹਨਾਂ ਨੇ ਮਿਲਣਾ ਹੀ ਸੀ ਜੇ ਸਲੀਨ ਰੌਬਨਸਨ ਨਾ ਵੀ ਛੱਡ ਦੇ ਸੋ ਇਹ ਮੀਟਿੰਗ ਹੋਰਨੀ ਅਰੇਂਜ ਕੀਤੀ ਗਈ ਸੋ ਪਹਿਲਾਂ ਦੀ ਇਹ ਅਰੇਂਜ ਕੀਤੀ ਹੋਈ ਆ ਅੱਜ ਦੇਖਦੇ ਹਾਂ ਕਿ ਇਸ ਮੀਟਿੰਗ ਦੇ ਵਿੱਚੋਂ ਕੀ ਨਿਕਲਦਾ ਹੈ ਕਮਿਊਨਿਟੀ ਨੂੰ ਉਹ ਕੀ ਜਵਾਬ ਦਿੰਦੇ ਨੇ ਤੇ ਕਿਉਂਕਿ ਜਿਹੜੀ ਇਹ ਸਟ੍ਰੈਟਜੀ ਤਾਂ ਠੀਕ ਹੈ ਕਿ ਇੱਕ ਜੀਓ ਮਿਨਿਸਟਰ ਕਹਿ ਰਹੇ ਨੇ ਕਿ ਮੇਰੇ ਤੇ ਮੇਰੇ ਨਾਲ ਕੋਈ ਖੜਿਆ ਨਹੀਂ میرے نوید کرا کر دے رہے ہے تے دوسری جڑے جیو منسٹر نے انوائرنمنٹ دے منسٹر او کہہ رہے نے کہ مینوں کوئی سمسیا نہیں میرے نال تو ساری ٹھیک ٹھاک نہیں ام باقی ایک ہور خبر آئی ہے کہ لاس اینجلز تو جاپان نو جاندے ہوائی جہاز دے پئے ڈگ پئے تھلے اور ایک پیا جڑا آ کے ڈگ گیا تاں کار دے اوپر اٹ گیا جو نقصان ہو ਬੰਦਾ ਕੋਈ ਜ਼ਖਮੀ ਨਹੀਂ ਹੋਇਆ ਬਾਈ ਚਾਂਸ ਪਾਰਕਿੰਗ ਲਾਟ ਦੇ ਵਿੱਚ ਉਸ ਵਕਤ ਕੋਈ ਵਿਅਕਤੀ ਹੈ ਨਹੀਂ ਸੀ ਲੇਕਿਨ ਲਾਸ Ăਂਜਲੈਸ ਤੋਂ ਜਾਪਾਨ ਨੂੰ ਜਾ ਰਹੀ ਇਹ ਫਲਾਈਟ ਦੇ ਬਾਰੇ ਵਿੱਚ ਹਲੇ ਸਿਰਫ ਇਹਨੀ ਦੋ ਲਾਈਨਰੀ ਆਈ ਹੈ ਹੋਰ ਇਸ ਦੀ ਡੀਟੇਲ ਆਉਣ ਵਾਲੀ ਹੈ ਅਮ ਬਾਕੀ ਮਤਲਬ ਦੱਸਿਆ ਕਿ ਰੌਬਨਸਨ ਨੂੰ ਬਹੁਤ ਖਬਰਾਂ ਆ ਰਹੀਆਂ ਨੇ ਜਿਹੜੀਆਂ ਖਾਸ ਤੌਰ ਤੇ ਜਿਊਸ਼ ਕਮਿਊਨਿਟੀ ਨਾਲ ਸੰਬੰਧਿਤ ਨੇ ਇਕ ਪ੍ਰੈਕਟਰਾਇਜ਼ੇਸ਼ਨ ਬਾਰੇ ਗਲਪਤ ਚੱਲੀ ਹੈ ਬੇਸਿਕਲੀ ਉਹ ਕਹਿੰਨੇ ਕਿ ਇਨਕੁਆਰੀ ਕਰਾਉ ਇਸ ਦੀ ਪਬਲਿਕ ਇਨਕੁਆਰੀ ਕਰਾ ਜਿਹੜੀ ਕਿਪਰਤੀ ਤੋਂ ਦੀ ਹੈ ਹੁਣੀ ਨਹੀਂ ਆਟਵਾ ਦੇ ਵਿੱਚ ਜਿਹੜੀਆਂ 6 ਲਾਸ਼ਾਂ ਦੀ ਕਹਾਣੀ ਸੀ ਉਸ ਦੇ ਸਬੰਧ ਚ 19 ਸਾਲ ਦਾ ਇੱਕ ਮੁੰਡਾ ਗ੍ਰਿਫਤਾਰ ਕੀਤਾ ਗਿਆ ਹੈ ਆਟਵਾ ਦੀ ਇੱਕ ਨਵੀਂ ਕਲੋਨੀ ਦੇ ਵਿੱਚ ਬੁੱਧ ਧਰਮ ਨੂੰ ਮੰਨਣ ਵਾਲੇ ਇੱਕ ਪਰਿਵਾਰ ਦੇ ਜਿਹੜੇ 6 ਮੈਂਬਰ ਸੀ ਉਹੋ ਕਤਲ ਕਰ ਦਿੱਤੇ ਗਏ ਜਿਨ੍ਹਾਂ ਦੇ ਵਿੱਚ 35 ਸਾਲਾਂ ਦੀ ਮਾਂ ਦਰਸ਼ਨੀ ਚਾਰ ਬੱਚੇ ਸਨ ਤੇ ਇੱਕ ਉਹਨਾਂ ਦਾ 40 ਸਾਲਾਂ ਦਾ ਰਿਸ਼ਤੇਦਾਰ ਸੀ ਉਸ ਦਰਸ਼ਨੀ ਦਾ ਹਸਬੰਦ ਜਿਹੜਾ ਉਹ ਗੰਭੀਰ ਜ਼ਖਮੀ ਹੋਇਆ ਹਸਪਤਾਲ 'ਚ ਦਾਖਲ ਹੈ ਤੇ ਅੰਤਾਂ ਦਾ ਉਦਾਸ ਹੈ ਇਸ ਸਬੰਧ ਵਿੱਚ ਜਿਹੜਾ 19 ਸਾਲ ਦਾ ਮੁੰਡਾ ਗ੍ਰਫਤਾਰ ਕੀਤਾ ਗਿਆ ਉਹ ਵੀ ਸ੍ਰੀਲੰਕਨ ਹੀ ਹੈ ਤੇ ਸ੍ਰੀਲੰਕਾ ਦੇ ਇਸ ਪਰਿਵਾਰ ਨੇ ਇਸ ਮੁੰਡੇ ਨੂੰ ਇੰਟਰਨੈਸ਼ਨਲ ਸਟੂਡੈਂਟ ਆਇਆ ਸੀ ਆਪਣੇ ਘਰੇ ਰੱਖ ਲਿਆ ਸੀ ਔਰ ਉਹ ਉਹ ਉਹਨਾਂ ਦੀ ਬੇਸਮੈਂਟ 'ਚ ਰਹਿੰਦਾ ਸੀ ਹਲੇ ਕਹਾਣੀ ਕੀ ਹੋਈ ਏ ਤੇ ਪਤਾ ਨਹੀਂ ਪਰ 19 ਸਾਲ ਦੇ ਮੁੰਡੇ ਨੇ ਤਥ ਤੋਰ ਤੇ ਕਤਲ ਕੀਤੇ ਹਨ ਜਿਸ ਨੂੰ ਉੱਥੇ ਗ੍ਰਿਫਤਾਰ ਕਰਕੇ ਤੇ ਹੁਣ ਕੇਸ ਦੀ ਰਿਪੋਰਟ ਤਬਦੀਸ਼ ਹੋ ਰਹੀ ਹੈ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਕਿਰਾਏ ਤੇ ਰਹਿੰਦੇ ਨੇ ਕੀਏ ਕਿਰਾਏ ਤੇ ਰਹਿੰਦਾ ਸੀ ਇਸ ਸੰਬੰਧ ਦੇ ਵਿੱਚ ਹਲੇ ਜਿਹੜੀ ਮੁਕੰਮਲ ਜਾਣਕਾਰੀ ਹੈ ਉਹ ਔਣੀ ਬਾਕੀ ਹੈ ਲੇਕਿਨ ਇਹ ਪੂਰੇ ਦਾ ਪੂਰਾ ਪਰਿਵਾਰ ਜਿਹੜਾ ਉਸ مشردਾਂਝਲੀਆਂ ਅਰਪਣ ਕਰ ਰਹੇ ਨੇ ਆਂਡ ਗਵਾਂਡ ਦੇ ਵਿੱਚ ਬਹੁਤ ਚੰਗੇ ਆਂਡੀ ਗਵਾਂਡੀ ਨੇ ਉਹਨਾਂ ਨੂੰ ਸ਼ੁਦਾਂਝਲੀ ਦੇ ਤੌਰ ਤੇ ਫੁੱਲ ਬੱਚਿਆਂ ਲਈ ਖੇਡਾਂ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਦੇ ਦਰਵਾਜ਼ੇ ਅੱਗੇ ਰੱਖ ਕੇ ਜਾ ਰਹੇ ਹਨ ਅੱਜ ਸਟੈਟਸ ਕੈਨੇਡਾ ਦੀ ਇੱਕ ਰਿਪੋਰਟ ਆਈ ਹੈ ਕਿ ਜੌਬਸ ਹੋਰ ਬਹੁਤ ਨਿਕਲੀਆਂ ਨੇ 48000 ਜੌਬ ਕਹਿੰਦੇ ਤਕਰੀਬਨ ਟੂ ਬੀ ਐਗਜ਼ੈਕਟ 40700 ਜੌਬਸ ਕਹਿੰਦੇ ਨਮੀਆਂ ਹੋਰ ਐਡ ਹੋਈਆਂ ਨੇ ਸਟੈਟਿਸਟਿਕਸ ਕੈਨੇਡਾ ਪਤਾ ਨਹੀਂ ਕਿਸ ਤਰੀਕੇ ਨਾਲ ਇਹ ਅੰਕੜੇ ਕੱਢਦੇ ਆ ਅ ਸੋ ਬੇਰੋਜ਼ਗਾਰੀ ਜਿਹੜੀ ਆ ਉਹ 5.8% ਤੇ ਹੋਰ ਉੱਪਰ ਚਲੀ ਗਈ ਹੈ ਲੇਕਿਨ ਜੌਬਸ ਜਿਹੜੀਆਂ 40700 ਕਿੱਥੇ ਗਈਆਂ ਨੇ ਤੁਸੀਂ ਦੇਖਦੇ ਹੋਗੇ ਜ਼ਮੀਨੀ ਹਕੀਕਤ ਇਹ ਆ ਕਿ ਜੇ ਸਕਾਟਵਰਡ ਦੇ ਇਸ ਤਿਤ ਕਿਸੇ ਰੈਸਟੋਰੈਂਟ ਦੇ ਵਿੱਚ ਦੋ ਜੌਬਾਂ ਵੀ ਨਿਕਲ ਆਉਂਦੀਆਂ ਨੇ ਤਾਂ ਸੈਂਕੜੇ ਇੰਟਰਨੈਸ਼ਨਲ ਸਟੂਡੈਂਟਸ ਦੀਆਂ ਹੋਰ ਯੰਗ ਮੁੰਡੇ ਕੁੜੀਆਂ ਦੀਆਂ ਲਾਈਨਾਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਨੇ ब्रैमटन ਦੇ ਵਿੱਚ ਕੋਈ ਚਾਰ ਜਾਂ 5 ਐਮਪਲੋਈ ਰੱਖਣੇ ਆ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਸਟੂਡੈਂਟਸ ਲੰਬੀਆਂ ਕਤਾਰਾਂ ਲਾ ਲੈਂਦੇ ਨੇ ਜਾਂ ਦੂਸਰੇ ਜਿਹੜੇ ਰੋਜ਼ਗਾਰ ਲੱਭ ਰਹੇ ਯੰਗ ਯੂਥ ਹੈ ਉਹਨਾਂ ਨੇ ਲੰਬੀਆਂ ਲਾਈਨਾਂ ਹੁੰਦੀਆਂ ਨੇ ਲੇਕਿਨ ਉਹ ਕਹ ਰਹੇ ਨੇ ਕਿ 40790 ਨੌਕਰੀਆਂ ਨਿਕਲੀਆਂ ਨੇ ਅਤੇ ਬੇਰੁਜ਼ਗਾਰੀ ਦਰ ਪਰ ਫਿਰ ਵੀ 5.8% ਹੋ ਗਈ ਹੈ ਕਿਉਂਕਿ ਪੋਪੂਲੇਸ਼ਨ ਗਰੋਥ ਜਿਹੜੀ ਲਗਾਤਾਰ ਹੋ ਰਹੀ ਹੈ ਪਰ ਹਾਲੇ ਵੀ ਹਾਲੇ ਵੀ 8 मिलियन ਲੋਕ ਜਿਹੜੇ ਨੇ ਵਰਕ ਪਰਮਿਟਸ ਦੇ ਉੱਤੇ ਰਿਫਿਊਜੀ ਸਟੇਟਸ ਦੇ 노 ਸਟੇਟਸ ਵਾਲੇ ਲੋਕ ਕੈਨੇਡਾ ਚ ਰਹਿ ਰਹੇ ਹਨ ਉਹ মিলিয়ন ਲੋਕਾਂ ਦਾ ਕੀ ਬਣਨਾ ਹੈ ਕੱਲ ਸਾਡੇ ਸਟੂਡੀਓਜ਼ ਦੇ ਵਿੱਚ ਕੰਜ਼ਰਵੇਟਰ ਪਾਰਟੀ ਦੇ ਲੀਡਰ ਮਿਸਟਰ ਪੋਲੀਏਵ ਆਏ ਸਨ ਮੈਂ ਉਹਨਾਂ ਨੂੰ ਵੀ ਪੁੱਛਿਆ ਸੀ ਓਕੇ ਇਹਨਾਂ ਨੂੰ ਤੁਸੀਂ ਪੱਕੇ ਕਰਦੇ ਹੋ ਕਿ ਪੈਨ ਦੀ ਇੱਕ ਸਟ੍ਰੋਕ ਨਾਲ ਉਹ ਕਰਨੇ ਹਾਂ ਜਿਹੜੇ ਟੈਕਸ ਪੇਅਰਸ ਨੇ ਟੈਕਸ ਨਹੀਂ ਦੇਨੇ ਉਹਨਾਂ ਦਾ ਜਿਹੜਾ ਇੱਥੇ ਲਾਅ ਐਂਡ ਆਰਡਰ ਨੂੰ ਮੰਨਦੇ ਨਹੀਂ ਉਹਨਾਂ ਨੂੰ ਕੰਸੀਡਰ ਕੀਤਾ ਜਾਏਗਾ ਕੇਸ ਬਾਈ ਕੇਸ ਡਿਸਾਈਡ ਕਰਾਂਗੇ ਕਿ ਕੌਣ ਰਹਿ ਸਕਦਾ ਕੌਣ ਨਹੀਂ ਯਕਦਮ ਇਹਨਾਂ ਨੂੰ ਪੱਕੇ ਨਹੀਂ ਕਰਾਂਗਾ ਮੈਂ ਜੇ ਉਹ ਵੀ ਮੈਂ ਇਹਨੂੰ ਪੁੱਛ ਜੇ ਤੁਸੀਂ ਪ੍ਰਧਾਨ ਮੰਤਰੀ ਬਣ ਜਾਂਦੇ ਹੋ ਇਹ ਬੜੀ ਉਮੀਦ ਸੀ ਕਿ ਜੇ ਉਹ ਪ੍ਰਧਾਨ ਮੰਤਰੀ ਬਣ ਜਾਂਦੇ ਨਹੀਂ ਤਾਂ ਯਕ ਮੁਫਤ ਉਹੋ ਅ ਕਹਦੇ ਨੇ ਕਿ ਯਾ ਇਹ ਲੋਕਾਂ ਨੂੰ ਪੀਆਰ ਦੇ ਦਿੱਤੀ ਜਾਏ ਜਿਹੜੇ 1 ਮਿਲੀਅਨ ਲੋਕ ਇੱਥੇ ਬੈਠੇ ਨੇ ਪਰ ਉਹ ਕਹਿੰਦੇ ਨਹੀਂ ਮੈਂ ਇਸ ਤਰ੍ਹਾਂ ਨਹੀਂ ਕਰਾਂਗਾ ਮੈਂ ਕੱਲੇ-ਕੱਲੇ ਕੇਸ ਨੂੰ ਵੇਖਾਂਗਾ ਕਿ ਉਹ ਕੌਣ ਹਨ ਕੀ ਕਰਦੇ ਨੇ ਉਹਨਾਂ ਦਾ ਪਿੱਛੋਕੜ ਕੀ ਹੈ ਕਿਸ ਤਰ੍ਹਾਂ ਆਏ ਨੇ ਤੇ ਕੀ ਉਹਨਾਂ ਦਾ ਇੱਥੇ ਸੋਸਾਇਟੀ ਦੇ ਵਿੱਚ ਵਰਤਾਓ ਹੈ ਸੋ ਇਸ ਕਿਸ ਤਰ੍ਹਾਂ ਗੱਲਾਂ ਦੇਖ ਕੇ ਉਹ ਕਹਿੰਦੇ ਵੇਖਿਆ ਜਾਏਗਾ ਹਾਂ ਉਹਨਾਂ ਨੇ ਇਸ ਇੰਟਰਵਿਊ ਦੇ ਵਿੱਚ ਇੱਕ ਗੱਲ ਜ਼ਰੂਰ ਮੇਰੇ ਨਾਲ ਕਰਦੇ ਹੋਏ ਦੱਸੀ ਮਨਨ ਪੁੱਛਿਆ ਸੀ ਜੀ ਵੀ ਇਹ ਪੈਸੇ ਜਿਹੜੇ ਲਟਾਏ ਜਾ ਰਹੇ ਆ ਪਦੇ ਮਿਲੀਅਨ ਡਾਲਰ 4 ਮਿਲੀਅਨ ਇਸ ਮੁਲਕ ਨੂੰ ਫਲਾ ਨਾਮ ਮੁਲਕ ਨੂੰ ਤੇ ਉਨਕੀ ਮੁਲਕ ਨੂੰ ਆਪਣੇ ਮੁਲਕ ਦੇ ਵਿੱਚ ਤਾਂ ਪੂਰਾ ਨਹੀਂ ਫਟ ਰਿਹਾ ਸਾਡੇ ਮੁਲਕ ਦੇ ਲੋਕ ਤਾਂ ਫੂਡ ਲਾਈਨਸ ਦੇ ਵਿੱਚ ਖੜੇ ਆ ਬੈਂਕਾਂ ਦੇ ਵਿੱਚ ਫੂਡ ਬੈਂਕ ਕੋਲੇ ਖਾਣਾ ਨਹੀਂ ਹੈ ਉਹ ਕਹਿੰਦੇ ਬਈ ਮੈਂ ਇਹ ਫੋਰਨ ਇਹ ਬੰਦ ਕਰ ਦੇਂਗਾ ਜਿੰਨੀ ਦੇਰ ਤੱਕ ਸਾਡਾ ਜਿਹੜਾ ਬ੍ਰੋਕਨ ਸਿਸਟਮ ਠੀਕ ਨਹੀਂ ਹੁੰਦਾ ਸੋ ਇਸ ਕਿਸ ਮੀ ਗੱਲਬਾਤ ਹੋਈ ਹੋਰ ਵੀ ਉਹਨਾਂ ਨੇ ਕਾਫੀ ਗੱਲਾਂ ਭਈਆਂ ਤੁਸੀਂ ਸੁਣੀ ਇੰਟਰਵਿਊ ਅ ਇੱਕ ਹੋਰ ਖਬਰ ਜਿਹੜੀਆਂ ਆ ਰਹੀਆਂ ਨੇ ਸੂਕੇ ਸੁਕ ਜਿਹੜਾ ਸਕੂਲ ਡਿਸਟ੍ਰਿਕਟ ਆ ਉਹਦੇ ਪੈਸੇ ਮੁੱਕ ਗਏ ਆ ਵੈਂਕੋਰ ਆਇਲੈਂਡ ਦੇ ਉੱਤੇ ਸੁਕ ਸਕੂਲ ਡਿਸਟ੍ਰਿਕਟ ਆ ਉਹ ਕਹਿੰਦੇ ਸਾਡੇ ਕੋਲ ਹੁਣ ਕੋਈ ਪੈਸਾ ਨਹੀਂ ਰਿਹਾ ਇਸ ਕਰਕੇ ਜਿਹੜੀਆਂ ਸਕੂਲ ਬੱਸਾਂ ਦੇ ਉੱਤੇ ਬੱਚੇ ਆਉਂਦੇ ਆ ਪਰਿਵਾਰਾਂ ਨੂੰ ਆਪਣੇ ਬੱਚਿਆਂ ਦਾ ਆਪ ਕਰਾਇਆ ਦੇਣਾ ਪਿਆ ਕਰਨਾ ਇਫ ਬੱਸ ਸਰਵਿਸ ਅਸੀਂ ਫ੍ਰੀ ਨਹੀਂ ਰਨ ਕਰ ਸਕਦੇ ਹੁਣ ਕਿਉਂਕਿ ਸਾਡੇ ਕੋਲੇ ਜਿਹੜਾ ਬਜਟ ਦੇ ਵਿੱਚ ਪੈਸੇ ਨਹੀਂ ਹਨ ਟਰਾਂਸਪੋਰਟੇਸ਼ਨ ਫੀ 20 ਤੋਂ 24 ਤੋਂ 25 ਦੀ ਇਹ ਮਾਪੇ-ਪੇ ਕਰਨੀ ਹੈ ਮਾਪੇ ਜਾਂ ਗਾਰਡੀਅਨ ਜੋ ਵੀ ਹੈ ਨੇ ਉਹਨਾਂ ਨੂੰ ਪੇ ਕਰਨਾ ਪੈਣਾ ਉਹ ਕਹਿੰਦੇ 인ਫਲੇਸ਼ਨ ਇੰਨੀ ਆ ਸਟੂਡੈਂਟਸ ਦੀ ਗਿਣਤੀ ਬਹੁਤ ਵੱਧ ਗਈ ਹੈ ਇਸ ਰੀਜਨ ਦੇ ਵਿੱਚ ਕਿਉਂਕਿ ਉੱਥੇ ਬਹੁਤ سارے ਲੋਕ ਮੂਵ ਹੋ ਗਏ ਨੇ ਇਸ ਕਰਕੇ ਟਰਾਂਸਪੋਰਟੇਸ਼ਨ ਕਾਸਟ ਜਿਹੜੀ ਹੈ ਉਹ ਵਧੀ ਜਾ ਰਹੀ ਹੈ ਤੇ ਅਸੀਂ ਇਹ برداشت ਨਹੀਂ ਕਰ ਸਕਦੇ ਬੋਰਡ ਆਫ ਦ ਐਜੂਕੇਸ਼ਨ ਉਹ ਤਾਂ ਦੇ ਬਹੁਤ ਮੁਸ਼ਕਲ ਸਮੇਂ ਚੋਂ ਗੁਜ਼ਰ ਰਿਹਾ ਹੈ ਸਾਡੇ ਕੋਲੇ ਪੈਸੇ ਖਤਮ ਹੋ ਰਹੇ ਨੇ ਇਸ ਕਰਕੇ ਮਾਪੇ ਬੱਚਿਆਂ ਦੀ ਸਕੂਲ ਬੱਸ ਦਾ ਕਿਰਾਇਆ ਆਪ ਦੇ ਆਕਰਨ ਹੂੰ ਕਈ ਲੋਕ ਸਮਝਦੇ ਕਿ ਸ਼ੁਰੂਆਤ ਹੈ ਜਿਉਂ ਜਿਉਂ ਆਬਾਦੀ ਵਧੀ ਚਲੀ ਗਈ ਆ ਬੱਚੇ ਹੋਰ ਵਧ ਗਏ ਸਰੀ ਵਰਗੇ ਸਕੂਲ ਡਿਸਟ੍ਰਿਕਟ ਦੇ ਵਿੱਚ ਵੀ ਇਸ ਨਾਲ ਇੱਕ ਦੇ ਮੁਸੀਬਤ ਨਾ ਆਪ ਹੈ ਅ ਬੱਕੀ ਕਰੀਬੀਅਨ ਕਰੂਜ਼ ਸ਼ੁਰੂ ਹੋ ਗਏ ਨੇ ਮਾਰਚ ਦੀ ਬ੍ਰੇਕ ਜਿਹੜੀ ਆਉਣ ਵਾਲੀ ਹੈ ਅ ਸੋ ਪੈਂਡੈਮਿਕ ਦੇ ਵਿੱਚ ਬਹੁਤ ਸਾਰੇ ਲੋਕ ਜਾ ਨਹੀਂ ਸੀ ਸਕੇ ਖੁਰਨਾ ਉਹ ਸਾਰੇ ਜਿਹੜੇ ਨੇ ਬੱਚਿਆਂ ਨੂੰ ਲੈ ਕੇ ਜਾਣਾ ਚਾਹੁੰਦੇ ਨੇ ਮਾਰਚ ਦੀ ਜਿਹੜੀ ਸਕੂਲ ਬ੍ਰੇਕ ਹੋਇਆ ਕਰਦੀ ਹੈ ਬੜੀ ਬਹੁਤ ਹੈ ਇਸ ਤੋਂ ਬਿਨਾ ਇੱਕ ਹੋਰ ਖਬਰ ਜਿਹੜੀ ਫਰਡੇ ਨਿਊਜ਼ ਹੈ ਉਹ ਇਹ ਹੈ ਕਿ 92 ਸਾਲਾਂ ਦਾ ਮੀਡੀਆ ਮਗਲ ਰੂਪਰਟ ਮਰਡੌਕ ਜਿਹੜਾ ਕਿ ਨਵਾਂ ਵਿਆਹ ਕਰਵਾ ਰਿਹਾ ਹੁਣ ਇਹ ਪੰਜਵਾਂ ਵਿਆਹ ਉਹਦਾ ਉਹਦੀ ਦੁਲਹਨ ਹੈ ਜਿਹੜੀ 48 ਸਾਲਾਂ ਦੀ ਹੈ ਉਹਨਾਂ ਨੇ ਮੰਗਣਾ ਕਰਵਾ ਲਿਆ ਹੈ ਅਤੇ ਦੋਨੇ ਪਹਿਲੇ ਜੂਨ ਨੂੰ ਕੈਲੀਫੋਰਨੀਆ ਦੇ ਵਿੱਚ ਸ਼ਾਦੀ ਕਰ ਰਹੇ ਨੇ ਅ ਕਾਫੀ ਲੰਬੀ ਖਬਰ ਹੈ ਮਰਡੌਕ ਜਿਹੜੇ ਨੇ ਉਹਨਾਂ ਦੀ ਪਹਿਲਾਂ ਚਾਰ ਸ਼ਾਦੀਆਂ ਹੋ ਚੁੱਕੀਆਂ ਨੇ ਹੁਣ ਇਹ ਪੰਜਵੀਂ ਉਹਨਾਂ ਦੀ ਸ਼ਾਦੀ ਹੋਏਗੀ ਅ ਬਾਕੀ ਖਬਰਾਂ ਆ ਗਈਆਂ ਨੇ ਖਬਰਾਂ ਤੋਂ ਬਾਅਦ ਅਗਲੀ ਗੱਲਬਾਤ ਜਿਹੜੀ ਚੱਲਣ ਵਾਲੀ ਹੈ ਕਿ ਪਰਮੇਥ ਕਾਮਰਾਜੀ ਸਾਡੇ ਫੀਲਡ ਰਿਪੋਰਟਰ ਨੇ ਕੱਲ ਸ੍ਰੀਮੌਰ ਹਸਪੀਟਲ ਦੇ ਵਿੱਚ ਹੈਲਥ ਮਿਨਿਸਟਰ ਕੀ ਐਲਾਨ ਕਰਕੇ ਗਏ ਨੇ ਇਸ ਬਾਰੇ ਗੱਲਬਾਤ ਹੋਏਗੀ ਅਤੇ ਅੱਜ ਇੰਟਰਨੈਸ਼ਨਲ ਔਮਨਡੇ ਦੇ ਉੱਤੇ ਕਾਫੀ ਗੱਲਬਾਤ ਹੋਣ ਵਾਲੀ ਹੈ ਤੇ ਹਾਂ ਮਾਂ ਜਿਹੜੀ ਮਨਾਈ ਜਾ ਰਹੀ ਹੈ ਅਮ ਸ਼ਿਵ ਜੀ ਦੀ ਰਾਤ ਔਰ ਇਸ ਦੇ ਵਿੱਚ ਕੱਲ ਹੀ ਮੰਦਰ ਦੇ ਵਿੱਚ ਸਾਡੇ ਲੋਕਲ ਮੰਦਰ ਦੇ ਵਿੱਚ ਅਸੀਸ਼ ਕੁਮਾਰ ਹੋਰਾਂ ਨੇ ਦੱਸਿਆ ਵੀ ਸੀ ਕਿ ਬਹੁਤ ਰੌਣਕਾਂ ਲੱਗੀਆਂ ਸਨ ਤੰਬੂਗਰੇ ਲੱਗ ਚੁੱਕੇ ਹਨ ਅੱਜ ਵੀ ਉੱਥੇ ਸ਼ਰਧਾਲੂ ਆ ਰਹੇ ਨੇ ਤੇ ਸਾਰਾ ਦਿਨ ਇਸ ਕਿਸਮ ਦਾ ਮਾਹੌਲ ਉੱਥੇ ਬਣਿਆ ਰਹੇਗਾ ਔਰ ਉਹਨਾਂ ਨੇ ਆਈਸ ਦਾ ਸ਼ਿਵਲਿੰਗ ਬਣਾਇਆ ਹੈ ਕਿ ਇੱਥੇ ਕੱਠ ਬਹੁਤ ਹੋਣਾ ਉਹਨਾਂ ਨੇ ਬੇਨਤੀ ਕੀਤੀ ਸੀ ਕਿ ਸਾਰੇ ਲੋਕਾਂ ਰਾਂ ਲੈ ਕੇ ਨਾ ਆਉਣ ਉਹ ਕਿਉਂਕਿ ਉੱਥੇ ਪਾਰਕ ਦੀ ਸਮੱਸਿਆ ਆ ਜਾਂਦੀ ਹੈ ਸੋ ਇਸ ਕਰਕੇ ਇੱਕ ਦੋ ਜਣਾਂ রাইਡ ਲੈ ਕੇ ਆ ਸਕਦੇ ਨੇ ਲੋਕ ਪਰ ਸੜਕਾਂ ਦੇ ਉੱਤੇ ਦੋਨੇ ਪਾਸੇ 84 ਐਵਨੀ ਦੇ ਉੱਤੇ ਕਾਰਾਂ ਖੜੀਆਂ ਕੀਤੀਆਂ ਜਾ ਸਕਦੀਆਂ ਹਨ ਉਹਨਾਂ ਖ블ਾਂ ਦਾ ਸਮਾਂ ਹੋ ਗਿਆ is next sponsored by Jerry Brad Jerry Brad Mortgage is the Jerry Brad sare major banks naal deal karde han ate inna kol private funds vi available han residential commercial ya construction mortgage call Jerry Brad 6047628889 ya visit unit 201 1523056th avenue sponsored by Virk Vyas and Associate Lawyers brother sister the A team commercial the civil litigation property disputes builder liens the debt collection the de cases which moharat rakhni hai call Sonia Virk ya ja Jagmeet Virk 604 5900607 152 street highway 10 seri रेड ऑफ एमरजेंस रूम ਤੋਂ quebranal گورਵਿੰਦਰ ਹੰਤਰਾ ਹਾਜ਼ਰ ਹੈ ਮਰੀਜ਼ ਤੇ ਮੁੱਕਾ ਵਾਲੀ ਨਰਸ ਨੂੰ ਨੌਕਰੀ ਤੋਂ ਮੁਅਤਲ ਕੀਤਾ ਜਾ ਰਿਹਾ ਹੈ ਅਗਸਤ ਬੜੇ ਜ਼ੋਰ ਨਾਲ ਮੁੱਕਾ ਮਾਰਿਆ ਐਕਟੀਵੇਟਿਡ ਚਾਰਕੋਲ ਦੀ ਵਰਤੋਂ ਐਮਰਜੈਂਸੀ ਰੂਮ ਵਿੱਚ ਓਵਰਡੋਸ ਜਾਂ ਇਲਾਜ ਲਈ ਕੀਤੀ ਜਾਂਦੀ ਹੈ ਪਰ ਕਾਲਜ ਅਨੁਸਾਰ ਰਜਿਸਟਰਡ ਤੇ ਪਹਿਲਾਂ ਮਰੀਜ਼ ਨੇ बीसी कॉलेज BC کالج آف نرسز اینڈ میڈ وائوز اتے اس نرس وچارے ہوئے سمجھوتے مطابق 1 مہینے تک لچمن نو نوکری تو سسپینڈ کیتا جا رہا ہے۔ اپنے روزگار تے واپس اوندو پہلا اس نو اینگر مینجمنٹ تے ایتھکس richmond rcmp ਨੇ ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ ਵਾਲੇ ਡਰਾਈਵਰਸ ਤੇ ਸ਼ਿਕੰਜਾ ਕੱਸਣ ਦੇ ਮਕਸਦ ਨਾਲ ਲੇਕਿਨ ਨਵੀਂ ਤਕਨੀਕ ਨੂੰ ਅਪਣਾਉਣ ਦਾ ਫੈਸਲਾ ਕੀਤਾ richmond rcmp ਵੱਲੋਂ ਆਟੋਮੇਟਿਡ ਲਾਇਸੈਂਸ ਪਲੇਟ ਰੈਕੋਗਨੀਸ਼ਨ ਟੈਕਨੋਲੋਜੀ ਦੀ ਵਰਤੋਂ ਕੀਤੀ ਜਾਵੇਗੀ ਅਤਿ ਇਨਫਰ 红 ਸਮਰਵਲਨੀ ਦਸਿਆ ਇਸ ਆਟੋਮੇਟਿਡ ਤਕਨੀਕ ਸਦਕਾ 1 ਘੰਟੇ ਵਿੱਚ 3000 ਲਾਇਸੈਂਸ ਪਲੇਟਸ ਵਿਸਤਾਰਪੂਰਵਕ ਪੜੀਆਂ ਜਾ ਸਕਦੀਆਂ ਹਨ ਪਰ ਬੀਸੀਸੀ ਸਿਵਲ ਲਿਬਰਟੀਆਂ ਐਸੋਸੀਏਸ਼ਨ ਦੇ ਮੈਗਨ ਮੈਕਡਾਰਮਟ ਦਾ ਕਹਿਣਾ ਹੈ ਕਿ ਅਜਿਹੇ ਸੌਫਟਵੇਅਰ ਅਪਣਾਉਣ ਤੋਂ ਪਹਿਲਾਂ ਨਾਗਰਿਕਾਂ ਦੀ ਨਿੱਜਤਾ ਤੇ ਪੈਣ फरवरी महीने में देश के अर्थचारे नाल एक तारी हजार नवे रोजगार दे मौके जुड़े पर नौकरियां विच वद्दा मुल्क च वद्दी आबादी दी रफ्तार तों पीछे दसया जा रहा है स्टैट्स कनाडा दे लेबर सर्वे मुताबिक बेरोजगारी दर वद के सर्विस उत्पादन सेक्टर शामिल होइयां चो सब वाद रोजगार वद्दा फूड सर्विसेज अकोमोडेशन इस सेक्टर आसमान छू रहीयां ब्याज दरहां अर्थव्यवस्था ते दबाव वदा रहयां हां क्योंकि लोग खर्चियां ਕਰ ਰਹੇ ਹਨ ਅਤੇ ਇਸ ਨਾਲ ਕਾਰੋਬਾਰਾਂ ਲਈ ਵਿਕਰੀ 'ਚ ਕਮੀ ਵੇਖੀ ਜਾ ਰਹੀ ਹੈ ਪਰ ਮਜ਼ਬੂਤ ਆਬਾਦੀ ਵਿੱਚ ਵਾਧਾ ਇਸ ਦੇ ਕੁਝ ਪ੍ਰਭਾਵਾਂ ਨੂੰ ਇੱਕ ਪਾਸੇ ਜ਼ਰੂਰ ਕਰ ਰਿਹਾ ਹੈ ਉੱਚ ਆਬਾਦੀ ਵਾਧੇ ਨੇ ਆਰਥਿਕਤਾ ਵਿੱਚ ਵਧੇਰੇ ਖਪਤਕਾਰਾਂ ਅਤੇ ਕਾਮਿਆਂ ਨੂੰ ਸ਼ਾਮਲ ਕੀਤਾ ਜਿਸ ਨਾਲ ਦੇਸ਼ ਵਿੱਚ ਨੌਕਰੀਆਂ 'ਚ ਇਜ਼ਾਫਾ ਦੇਖਿਆ ਗਿਆ ਪਰ ਦੇਸ਼ ਦੀ ਬੇਰੋਜ਼ਗਾਰੀ ਦਰ ਅਜੇ ਵੀ ਲੇਬਰ ਮਾਰਕੀਟ ਦੀ ਕਮਜ਼ੋਰ ਤਸਵੀਰ दियाच अति से गई है औसत प्रति घंटा वेट साल दर साल हिसाब नाल 5 प्रतिशत वादा दर्ज करवा रहे हैं बीसी प्रीमियर डेविड बी द कहना है कि साहब का कैबिनेट मंत्री सलीना रॉबिन्सन दे एस्टीफेन को एक सुनेहे वजो वेख्या जा रहा है कि सत्ता के काबज एनडीपी नो टीम नाल मिलके किवें काम करना चाहिदा है साध्य साथ का साथियां ते एंटीसेमिटिज्म अति एंटीसेमिटिक टिप्पणियां दोष लगाए जाने वाले रॉबिन्सन दे बयान नो ने स्वीकार नहीं कीता बीसी प्रीमियर ने माना कि रॉबिन्सन अपनी फिक्रमंदी सीधे तौर ते जाहिर कर रहे विरोधी बीसी यूनाइटेड लीडर केविन ਨੇ ਨਿਊ ਡੈਮੋਕ੍ਰੇਟ ਕਾਕਸ ਵਿੱਚ ਐਂਟੀ ਸੈਮਿਟਿਜ਼ਮ ਦੇ ਲੱਗੇ ਦੋਸ਼ਾਂ ਤੇ ਹੈਰਾਨੀ ਦਾ ਪ੍ਰਗਟਾਵਾ ਕੀਤਾ ਤੇ ਆਜ਼ਾਦ ਜਨਤਕ ਜਾਂਚ ਦੀ ਮੰਗ मांग ਬੀਸੀ ਕੰਜ਼ਰਵੇਟਿਵ ਲੀਡਰ ਜੌਨ लीडर ਨੇ ਪ੍ਰੀਮੀਅਰ ਈਬੀ ਤੋਂ ਸਤੀਫੇ ਦੀ ਮੰਗ ਕੀਤੀ ਜਦਕਿ ਬੀਸੀ ਗ੍ਰੀਨ ਪਾਰਟੀ ਲੀਡਰ ਸੋਨੀਆ ਫਾਸਟਿਨੋ ਕਿਸਾਨ ਅਗਰਗ ਸਰਵੰਤ ਸਿੰਘ ਪੰਦੇਰ ਨੇ ਅੱਜ ਐਲਾਨ ਕੀਤਾ ਹੈ ਕਿ ਕਿਸਾਨ ਸੰਘਰਸ਼ ਦਿੱਲੀ ਦੀ ਬਜਰਾਏ ਹਰਿਆਣੇ ਦੀਆਂ ਬਰੂਹਾਂ ਤੋਹੀਂ ਲੜਿਆ ਜਾਵੇਗਾ ਕਿਸਾਨ ਟਕਰਾਜ ਨਹੀਂ ਪੈਣਗੇ ਸਰਵੰਤ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਰੋਕਾਂ ਹਟਾਉਣ ਤੋਂ ਬਾਅਦ ਕਿਸਾਨ ਦਿੱਲੀ ਕੂਚ ਕਰਨਗੇ ਉਨ੍ਹਾਂ ਕਿਹਾ ਕਿ ਬੰਦੂਕਧਾਰੀਆਂ ने ਆਜ ਨਾਈਜੀਰੀਆ ਦੇ ਉੱਤਰ ਪੱਛਮੀ खेतर ਦੇ ਸਕੂਲ ਤੇ ਹਮਲਾ ਕਰਕੇ ਘੱਟੋ-ਘੱਟ 287 ਵਿਦਿਆਰਥੀਆਂ ਨੂੰ ਅਗਵਾ ਕਰ ਲਿਆ। ਦੇਸ਼ ਵਿੱਚ ਹਫ਼ਤੇ ਤੋਂ ਵਿੱਚ ਘੱਟ ਸਮੇਂ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੇ ਅਗਵਾ ਹੋਣ ਦੀ ਇਹ ਦੂਜੀ ਘਟਨਾ ਰਹੀ। ਹਮਲਾਵਰਾਂ ਨੇ ਕਦੂਨਾ ਰਾਜ ਦੇ ਕੋਰੀਗਾ ਕਸਬੇ ਦੇ ਸਰਕਾਰੀ ਸਕੂਲ ਨੂੰ ਸਵੇਰੇ 8 ਵਜੇ ਕੇਰ ਲਿਆ ਸੀ। ਪ੍ਰਿੰਸੀਪਲ ਇਸਨ ਹੁਣ ਤੱਕ ਦੀਆਂ ਖਬਰਾਂ ਜੇਕਰ ਤੁਸੀਂ ਰੈਡ ਐਫ ਐਮ ਨਿਊਜ਼ ਰੂਮ ਤੱਕ ਕੋਈ ਖਬਰ ਪਹੁੰਚਾਉਣਾ ਚਾਹੁੰਦੇ ਹੋ ਤਾਂ ਰੈਡ ਐਫ ਐਮ ਨਿਊਜ਼ ਰੂਮ ਨੂੰ 6045989311 ਤੇ ਸੰਪਰਕ ਕਰੋ ਜਾਂ news@redfm.ca ਤੇ ਈਮੇਲ ਕਰੋ ਗੁਰਵਿੰਦਰ ਹੰਸ਼ਰਾਹ ਨੂੰ इजाज़त ਦਿਓ ਦਨਵਾਦ ਸਪੌਂਸਰਡ ਬਾਈ ਜੈਰੀ ਬਰਾਡ ਜੈਰੀ ਬਰਾਡ ਮਾਰਗੇਜਸ ਦੇ ਜੈਰੀ ਬਰਾਡ ਸਾਰੇ ਮੇਜਰ ਬੈਂਕਸ ਨਾਲ ਡੀਲ ਕਰਦੇ ਹਨ ਅਤੇ ਇਹਨਾਂ ਕੋਲ ਪ੍ਰਾਈਵੇਟ ਫੰਡਸ ਵੀ ਅਵੇਲੇਬਲ ਹਨ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਕੰਸਟਰਕਸ਼ਨ ਮਾਰਗੇਜ ਲਈ ਕਾਲ ਜੈਰੀ ਬਰਾਡ 6047628889 ਜਾਂ ਵਿਜ਼ਿਟ ਯੂਨਿਟ 201 1523056th ਐਵੇਨਿਊ ਸਪੌਂਸਰਡ ਬਾਈ ਵਿਰਕ ਵਿਆਸ ਐਂਡ ਐਸੋਸੀਏਟ ਲਾਇਰਜ਼ ਹਰ ਕਿਸਮ ਦੇ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਰੀਅਲ اسٹیਟ ਕਾਰਪੋਰੇਟ ਬਿਜ਼ਨਸ ਲਾਜ਼ ਸਬਡਿਵੀਜ਼ਨ ਵਿਲਜ਼ ਯੂ ਪ੍ਰੋਬੇਟ ਤੇ ਕੰਮ ਲਈ ਪੈਂਟ ਬਰਾਦੀ ਡੈਡੀਕੇਟਿ ਕਾਲ ਸੋਨੀਆ ਵਿੱਚ ਜਗਮੀਤ 6045900607 152 ਸਟਰੀਟ ਤੇ ਹਾਈਵੇ ਟੈਂਸਰੀ ਰੈਡਫਿਮ 389.1 ਤੇ 93.1 CKYE ਕਰੇਨਾ ਦੇ ਹੋ ਰਹੇ ਐਕਸੀਡੈਂਟਸ ਕਰਕੇ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ ਕੰਸਟਰਕਸ਼ਨ ਇੰਡਸਟਰੀ ਦੇ ਵਿੱਚ ਉਪਰੋਥਲੀ ਕਈ ਇਨਸੀਡੈਂਟ ਇਹੋ ਜੇ ਹੋ ਗਏ ਨੇ ਇੱਕ ਔਰਤ ਮਾਰੀ ਵੀ ਗਈ ਹੈ ਤੇ ਵਰਕਸੇਫ ਵੀਸੀ ਵਾਲੇ ਕੀ ਕਰ ਰਹੇ ਹਨ ਇਸ ਲਈ ਸੁਜ਼ਾਨਾ ਪ੍ਰਪੈਕ ਗੱਲਬਾਤ ਸਾਨੂੰ ਕਰਨਗੇ ਹੈ ਸੁਜ਼ਾਨਾ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਸੁਜ਼ਾਨਾ ਹੈਲੋ ਕੈਨ ਯੂ ਹਿਅਰ ਮੀ Um, I think I have a problem, Maria. Um, hello. <laughs> Uh, Sanjana can you hear me Um mere khala ko technical difficulty hai san rohtpel on traffic the report prasarit kar rahe hain sir amandeep singh ji bilkul janab ji traffic the information maasi tunnel north bound richmond ja rahe koi delay nahi south bound delta mein kar rahe ho to traffic steeveson highway to blundal road ke darmiyan busy Windsor bridge northbound US-91 tak busy express bridge northbound Richmond nu jariye traffic westmiss highway to Lincoln Nelson road de darmiyan slow hai Petal bridge koi khaas dile ni portman bridge westbound jo to is sadhi to Vancouver nu ja rahe ho portman bridge uttar de sari traffic slow ho jayega invercor memorial bridge tak busy hai I-1 eastbound westbound episford to sari aur sari to episford koi khaas dile nahi tona milna speed da dhyan zarur rakho ਬਾਹਰ ਦਾ ਤਾਪਮਾਨ ਹੈ ਇਸ ਵੇਲੇ ਚਾਰ ਡਿਗਰੀ ਦਿਨ ਪਰ ਅੱਜ بارش ਤੇ ਸਾਹਤ ਨਜ਼ਰ ਆ ਰਹੇ ਨੇ ਤਕਰੀਬਨ 2-3 ਵਜੇ ਤੱਕ بارش ਰਹੇਗੀ 60 ਤੋਂ 70% ਚਾਂਸਸ ਨੇ ਅੱਜ بارش ਤੇ ਰਾਤ ਨੂੰ ਤਾਪਮਾਨ ਤਕਰੀਬਨ 6 ਤੋਂ 7 ਡਿਗਰੀ ਰਹੇਗਾ ਟੈਂਪਰੇਚਰ ਕੱਲ ਦਿਨ ਦਾ ਤਾਪਮਾਨ ਜਿਹੜਾ ਹੋ 10 ਡਿਗਰੀ 80% ਚਾਂਸਸ ਨੇ ਕੱਲ بارش ਤੇ ਐਤਵਾਰ ਵਾਲੇ ਦਿਨ 80% ਚਾਂਸਸ ਨੇ ਸੋਮਵਾਰ ਨੂੰ 70% ਚਾਂਸਸ ਦੱਸੇ ਗਏ ਨੇ ਯਾਨੀ ਕਿ ਸੋਮਵਾਰ ਤੋਂ ਮੰਗਲਵਾਰ ਤੱਕ بارش ਦੇ ਸੀ ਗਈ ਹੈ। ਟ੍ਰੈਫਿਕ ਅਪਡੇਟ ਨੇ ਸਪੌਂਸਰ ਕੀਤਾ ਹੈ ਮੈਥ ਫਾਰ ਮੀ ਨੇ ਕਿੰਡਰਗਾਰਟਨ ਤੋਂ ਲੈ ਕੇ 12ਵੇਂ ਗ੍ਰੇਡ ਤੱਕ ਤੁਸੀਂ ਆਪਣੇ ਬੱਚਿਆਂ ਨੂੰ ਮੈਥ ਫਾਰ ਦੇ ਰਿਸਰਚ ਬੇਸਡ ਟਿਊਟਰਿੰਗ ਪ੍ਰੋਗਰਾਮ ਦੇ ਵਿੱਚ انرੋਲ ਕਰ ਸਕਦੇ ਹੋ ਇਨ ਪਰਸਨ ਜਾਂ ਫਿਰ ਆਨਲਾਈਨ ਰਜਿਸਟ੍ਰੇਸ਼ਨ ਕਰੋ ਕੈਨੇਡਾ ਵਾਈਡ ਲੋਕੇਸ਼ਨਸ ਨੇ। 7788559306 mathforme.ca ਤੇ ਜ਼ਿਆਦਾ ਇਨਫਰਮੇਸ਼ਨ ਤੁਹਾਨੂੰ ਮਿਲ ਸਕਦੀ ਹੈ ਨੈਕਸਟ ਟ੍ਰੈਫਿਕ ਅਪਡੇਟ ਆਤਵਾਜ ਕੇ 35 ਮਿੰਟ ਤੇ ਆਵਾਜ਼ ਦੀ ਦੁਨੀਆ ਦੇ ਦੋਸਤੋ ਇਜਾਜ਼ਤ ਦਿਓ ਅਮਨਦੀਪ ਸਿੰਘ ਮੈਨੇਜਰ ਨੇ ਵਰਕਸੇਫ bc ਚੋ ਮਿਰਨਾਲ ਹਨ ਹੈਲੋ ਸੋਜ਼ਾਨਾ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਥੈਂਕ ਯੂ ਵੈਰੀ ਮੱਚ ਫਾਰ ਜੁਆਇਨਿੰਗ ਅਸ ਥੈਂਕ ਯੂ ਫਾਰ ਹੈਵਿੰਗ ਮੀ So can you provide us an overview of the recent crane related uh, accidents in Metro Vancouver and where is the investigation reaching? uh we've had for a uh, separate incident uh i'm not at liberty to speak about the details because as you can appreciate we're still in investigation uh but this is a huge concern for worksafe bc and it really underscores that worksafe at uh, workplace safety is critical and can never be taken for granted uh the incidents uh, as i said the incident investigations are ongoing uh we hope to get them uh done as soon as possible and share that information with uh everyone in the province Well um I understand uh you can't give us all the details but public has the right to know what are the you know basically fundamental findings that you have found during the investigation so people should know uh we need to complete the investigations um we can assure everyone that as uh we uh, developed key learnings uh, throughout completing the investigations that our officers conducting inspections across the province uh, are weaving some of that knowledge into their inspections so that we make sure that the controls are in place uh but as soon as we have that information we will share that information so is worksbc collaborating with the industry stakeholders we are collaborating with all industry stakeholders employers operators and especially workers uh that we interact with during our uh ongoing inspections across the province we have a dedicated crane inspection team that's doing great work all across the province this is a huge concern uh we are also continually looking at you know where things like new regulations may be appropriate so this is all done in a very collaborative manner So, can you highlight some of the key initiatives or uh, regulatory measures that you have implemented to improve the crane safety? Absolutely. Uh we've implemented last year two key regulatory changes uh that was zone limiting devices which are on uh, are required for tower crane use because these incidents have involved uh, tower cranes. Uh this prevents collisions uh we've also require requires that profession, uh, professional engineering supervision of inspections of the equipment to confirm that it's safe to use after uh an misadventure or contact so those were two things that were put in motion last year uh two upcoming proposed changes um in our in the works right now is a notice of project uh where work safe bc would be notified 2 weeks before cranes are erected uh, reposition dismantled those are key activities uh officers will attend these work sites and and work with employers operators uh and prime contractors on these sites to make sure that all requirements are in place so that the work can be done safely. Uh, secondly, uh we'll define safe for use, which again involves a professional engineer certifying a crane as safe after an annual inspection. So those are some of the things although as we collaborate and work with our industry and stakeholders, um there may be others that we'll reflect on. Well, I understand you cannot really um tell us um some details in their uh, in your investigation but what are the primary challenges uh, that ensure crane safety can you talk about these challenges great question all work activities these are high work high risk work activities and high risk operations on these sites all work needs to be very well planned uh well in advance of work starting uh these sites need to be coordinated and most of our workers they need to be well supervised have the right instruction and training and that's required by our act and by our regulation and we need to engage in discussions relating to these hazards these risks and the controls that need to be in place to keep our workers safe because we are getting some information from the crews that the operators qualifications and competency sometimes is not up to date those are issues that must be validated by all of the um folks that are in charge on the site be that the employers the prime contractors uh just to make sure that everything is in place before work starts that is the critical piece here mhm mm but isn't work safe bc contract the employers in order to check the operator's qualification and competency we absolutely do that's a key part of our exceptional approach uh to make sure that all of those things are in place and that uh, the certification is in place appropriate to the work being done that the supervisors uh providing oversight for the work are qualified as well so all of the pieces together that's what ensures the safety of the entire the entire job so سوزانا looking ahead what are the priorities and the future directions for work safe bc's grain safety initiatives as i said we need to ensure that all of these high risk work activities have the planning uh, uh you know, the planning is done in advance the safe work procedures are in place that the workers have the instruction that they need that the workers have the supervision that they need that the sites are coordinated so these these high risk work activities in and amongst all other construction related work activities on a site are properly coordinated that the workers are are well supervised trained and that workers are engaged in these conversations that's absolutely key so that we hear their concerns we under everyone understands the work to be done and work work can be conducted safely is there any time frame for completing the investigations so of public and no or it's an ongoing thing it's an ongoing there's a lot of different elements to consider but we hope to get that done as soon as possible so there's no timeline fixed No. Mhm. Mm Anything else you like to say in closing? I I can't uh, emphasize enough how critical it is that we engage workers in in these discussions relating to the hazards relating to their work each space, uh, the risks that has to be assessed based on that and the controls that has to be in place to make sure that every uh element of construction work happens safely. Mm -hmm. Suzanne, thank you very much for your time. I would really appreciate you uh holding on to um uh for a few minutes that we were delayed and happy international women's day to you thank you so much and and uh safe day for all of your listeners thank you for having me bye bye, bye, -bye. uh susanna perfect uh, senior manager ne je workshop bc to gal baat kar rahe san wo kande investigation bare te ni main darshav nahi thanu ke ki ho raha hai ਅ ਤੇ ਕੀ ਕੁਝ ਉਹਨਾਂ ਨੂੰ ਮਿਲਿਆ ਹਾਲੇ ਤੱਕ ਪਰ ਇਹ ਜ਼ਰੂਰ ਹੈ ਕਿ ਅਸੀਂ ਜਿੰਨੇ ਵੀ ਸਟੇਕ ਹোলਡਰਸ ਨੇ ਇੰਡਸਟਰੀ ਵਾਲੇ ਨੇ ਉਹਨਾਂ ਨਾਲ ਅਸੀਂ ਇਨ ਟੱਚਾਂ ਤੇ ਉਹਨਾਂ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਮੈਂ ਉਹਨਾਂ ਨੇ ਇਹ ਵੀ ਪੁੱਛਿਆ ਸੀ ਕਿ ਤੁਹਾਡੇ ਜਿਹੜੇ ਮੁੱਖ ਚੁਣੌਤੀਆਂ ਕੀ ਨੇ ਤੇ ਜਿਹੜੀ ਆਪਰੇਟਰ ਦੀ ਕੰਪੀਟੈਂਸੀ ਕੀ ਹੈ ਉਹ ਕਹਿੰਦੇ ਅਸੀਂ ਚੈੱਕ ਕਰਦੇ ਰਹਿੰਦੇ ਹਾਂ ਕਿਉਂਕਿ ਸਾਨੂੰ ਕੰਸਟਰਕਸ਼ਨ ਸਾਈਟਸ ਤੋਂ ਇਹ ਇਨਫਰਮੇਸ਼ਨ ਆਈ ਸੀ ਜਿਹੜੇ ਆਪਰੇਟਰ ਕ੍ਰੇਨ ਚਲਾਉਂਦੇ ਨੇ ਉਹ ਕੁਆਲੀਫਾਈਡ ਹੋਣੇ ਚਾਹੀਦੇ ਨੇ ਔਰ ਕਈ ਜਿਹੜੇ ਕੰਮ ਕਰਨ ਵਾਲੇ ਕੰਮੇ ਨੇ ਜਿਨ੍ਹਾਂ ਦੇ ਜਾਨ ਖਤਰੇ ਚ ਪੈ ਸਕਦੇ ਜਿਹੜੇ ਥੱਲੇ ਗਰਾਉਂਡ ਤੇ ਕੰਮ ਕਰਦੇ ਨੇ ਉਹਨਾਂ ਨੇ ਇਹ ਸ਼ੰਕਾ ਜ਼ਾਹਰ ਕੀਤੀ ਸੀ ਕਿ ਕੁਝ ਆਪਰੇਟਰ ਜਿਹੜੇ ਨੇ ਹੋ ਸਕਦਾ ਕਿ ਉਹਨਾਂ ਦੀ ਕੁਆਲੀਫਿਕੇਸ਼ਨ ਤੇ ਕੰਪੀਟੈਂਸੀ ਅਪ ਟੂ ਡੇਟ ਨਾ ਹੋਵੇ ਲੇਕਿਨ ਸੁਜ਼ਾਨਾ ਜੀ ਨੇ ਦੱਸਿਆ ਕਿ ਅਸੀਂ ਉਹਨਾਂ ਨਾਲ ਕੰਟੀਨਿਊਸਲੀ ਇਨ ਟੱਚ ਰਹਿਨੇ ਆਨ EMPLOYERS ਇਨ ਆਲ ਵੀ ਤਾਂ ਕਿ ਉਹਨਾਂ ਦੀ ਕੁਆਲਿਫਿਕੇਸ਼ਨ ਤੇ ਕੰਪੀਟੈਂਸੀ ਦਰਸਤ ਰਹੇ ਸੋ ਮੈਂ ਉਹਨਾਂ ਨੇ ਵੀ ਪੁੱਛਿਆ ਸੀ ਕਿ ਕੋਈ ਟਾਈਮ ਫਰੇਮ ਦੱਸ ਤਾਂ ਉਹਨਾਂ ਨੂੰ ਕਿ ਇਨਵੈਸਟੀਗੇਸ਼ਨ ਇਨ ਨੇਚਰ ਦੇ ਵਿੱਚ ਪੂਰੀ ਹੋ ਜਾਏਗੀ 6 ਮਹੀਨੇ 4 ਮਹੀਨੇ ਜਾਂ ਵਾਟਐਵਰ ਟਾਈਮ ਉਹ ਕਹਿੰਦੇ ਟਾਈਮ ਕੋਈ ਨਹੀਂ ਹੈ ਆਨ ਗoing ਇਨਵੈਸਟੀਗੇਸ਼ਨਸ ਨੇ ਸੋ ਖੀਤ ਜਮਨਨ ਤੋਂ ਤਾਂ ਗੱਲ ਕੀਤਾ ਹੈ ਤੇ ਅਗਲੀ ਗੱਲਬਾਤ ਜਿਹੜੀ ਆ ਪਰਮੇਤ ਕਮਰਾ ਜੀ ਸਾਡੇ ਨਾਲ ਕਰਨਗੇ ਕਿ ਕੱਲ ਸਰ ਮੈਮੋਰੀਅਲ ਹਸਪੀਟਲ ਦੇ ਵਿੱਚ ਹੈਲਥ ਮਿਨਿਸਟਰੀ ਸਨ ਉਹ ਜਿਹੜਾ ਦੁਖਪੰਝਨ ਕਿਡਨੀ ਵਾਰਡ ਹੈ ਤੁਹਾਡੇ ਜਿਹੜੇ ਫੰਡਸ ਅਸੀਂ ਕਤਰ ਕੀਤੇ ਸਨ ਤੁਸੀਂ ਪੈਸੇ ਦਿੱਤੇ ਸੀ ਉਸ ਦੇ ਨਾਲ ਹੀ ਕਿਡਨੀ ডিপਾਰਟਮੈਂਟ ਦੇ ਵਿੱਚ ਬਹੁਤ ਸਾਰਾ ਇਕਵਿਪਮੈਂਟ ਖਰੀਦਿਆ ਗਿਆ ਅਤੇ ਇਸ ਦਾ ਨਾਮ ਦੁਖਪੰਝਨ ਕਿਡਨੀ ਵਾਰਡ ਰੱਖਿਆ ਗਿਆ ਉਸ ਦੇ ਵਿੱਚ ਹੁਣ ਕੁਝ ਬੈਡਸ ਹੋਰ ਐਡ ਕੀਤੇ ਗਏ ਨੇ ਉਸ बारे ਜਿਹੜੇ ਸਾਡੇ ਨਾਲ ਅੱਜ ਸਾਡੇ ਜਿਹੜੇ ਰਿਪੋਰਟਰ ਨੇ ਫੀਲਡ ਰਿਪੋਰਟਰ ਨੇ ਪ੍ਰਮੇத் ਕਮਰਾਜੀ ਗੱਲਬਾਤ ਕਰਨਗੇ ਕੁਝ ਕੁ ਮਿੰਟਾਂ ਹੈਲੋ ਬਾਪੂ ਸਮਾਨ ਕੈਨੇਡਾ ਦੀ ਪੀਆਰ ਵਾਸਤੇ ਤੁਹਾਡਾ ਲਾਟਰੀ ਚ ਨਾਮ ਪਾਦਾ ਹੁਣ ਤਾਂ ਤੁਸੀਂ ਕੈਨੇਡਾ ਪਹੁੰਚੇ ਲਓ ਤੂੰ ਉਹ ਪਤਾ ਕਰ ਪੰਜਾਬ ਇੰਸ਼ੋਰੈਂਸ ਪੂਰੀਆਂ ਕਰਦਾ ਹੈ ਵਾਜਬ ਪ੍ਰੀਮੀਅਮ ਤੇ ਵਧੀਆ ਕਵਰੇਜ ਟੂ ਲੋਕੇਸ਼ਨਸ yo ਮੈਂ ਸੁਪਨਾ ਵੇਖਿਆ ਮੇਰਾ ਆਪਣਾ ਕਾਂਡੋ ਪੈਨੋਰਮਾ ਰਿਜ ایرੀਆ ਵਿੱਚ ਚੰਗਾ ਨੇਬਰਹੂਡ ਸਾਰੀਆਂ ਅਮਿਨਿਟੀਆਂ ਨੇੜੇ ਸੀ ਬੱਸ ਸਟਾਪ ਵੀ ਬਸ ਪੋゼਸ਼ਨ ਮਿਲਣ ਲੱਗਦਾ ਨੇ ਨੇ ਐਂਸਰ ਰਿਚ ਕਾਂਡੋ ਬਿਲਡਿੰਗ Now our 5G mobile plan sirf $50 per month with after automatic payments discount. Home service de naal fair karan te new activations and device upgrades only. Home Self plus infinite essentials plan with which conditions apply Rogers the 5G mobile plans lay visit 18696 Fraser Highway Surrey Kinetic Wireless Rogers authorized dealer Home of the Dutch Brothers बात कुछ तो बात हो गई किसी की तो बात है क्योंकि शुरू हो रहा है एंटरटेनमेंट का नया दौर करो स्ट्रीमर इतने एडमिटे सरदार आदमी नहीं करो स्ट्रीम ऐप है जहां मिलेंगे 150 से ऊपर हिंदी पंजाबी लाइव टीवी चैनल्स बॉलीवुड फिल्में और क्रिकेट मुगेंबो खुश हुआ क्योंकि ये सब आपको मिलेगा सिर्फ 14.99 सेंट में डाउनलोड नाउ करो स्ट्रीम ऐप ऑन ऑल स्मार्ट stream.com रेड एफएम सुन रहे हो ਤੁਸੀਂ ਸਰਫੀਲਡ رپورਟਰ ਪਰਮیت ਕਮਰਾ ਜੀ ਮੇਰੇ ਨਾਲ ਨੇ ਉਹਨਾਂ ਨਾਲ ਗੱਲਬਾਤ ਹੋਵੇਗੀ ਹਾਈਪਰਮਿਤ ਜੀ গুড ਮਾਰਨਿੰਗ ਮਿਸਟਰ ਥਿਨ ਐਟ ਅ ਗੁੱਡ ਮਾਰਨਿੰਗ ਬੈਡ ਐਫਐਮ ਲਿਸਨਰਸੋਵੇ ਅ ਗੁੱਡ ਮਾਰਨਿੰਗ ਜੀ ਕੱਲ ਸ੍ਰੀ ਮੋਡਲ ਹਸਪੀਟਲ ਦੇ ਦੁਖਪੰਚਨ ਕਿਡਨੀ ਵਾਰਡ ਦੇ ਵਿੱਚ ਜਦੋਂ ਹੈਲਥ ਮਿਨਿਸਟਰ ਆਏ ਤੇ ਕੀ ਐਲਾਨ ਕਰਕੇ ਗਏ ਨੇ ਜੀ ਮਿਸਟਰ ਥਿੰਦੇ कल आ, हेल्थ मिनिस्टर ਐਡਵੈਂਡਿਕਸ ਉਥੇ ਪਹੁੰਚੇ ਨੇ ਅਤੇ ਜਿਹੜੇ ਪਿਛਲੇ ਸਾਲ ਸਰੀ ਵਿੱਚ ਹੈਲਥ케ਅਰ ਕਰਾਈਸਿਸ ਹੋਇਆ ਸੀ ਅਤੇ ਕਾਫੀ ਵਿਵਾਦਪੂਰਨ ਰਹੀ ਸੀ ਉਸ ਸੰਬੰਧੀ ਜਿਹੜੇ ਉਹਨਾਂ ਨੇ 30 ਪੁਆਇੰਟ ਪਲਾਨ ਅਨਾਉਂਸ ਕੀਤਾ ਸੀ ਉਸ ਸੰਬੰਧੀ ਹੀ ਉਹਨਾਂ ਨੇ ਅਪਡੇਟ ਦਿੱਤਾ ਜਿਸ ਅਨੁਸਾਰ ਉਹਨਾਂ ਨੇ ਕਿਹਾ ਕਿ ਜਿਹੜੀਆਂ ਦੋ ਕੈਥ ਲੈਬ ਅਨਾਉਂਸ ਕੀਤੀਆਂ ਗਈਆਂ ਸਨ ਅਤੇ ਇੱਕ ਰੇਡੀਓਲੋਜੀ ਸੂਟ ਅਤੇ ਰੀਨਲ ਡੈਲਸਿਸ ਬਿਲਡਿੰਗ ਸੀ ਉਸ ਦੀ ਜਿਹੜੀ ਪਲੈਨਿੰਗ ਦਾ ਕੰਮ ਪੂਰਾ ਹੋ ਇੱਕ ਐਪਰੇਸ਼ਨ ਹੋ ਗਿਆ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜਿਹੜੇ 30 ਪੁਆਇੰਟ ਪਲਾਨਸ ਹਨ ਇਹਨਾਂ ਵਿੱਚੋਂ 13 ਮੁਕੰਮਲ ਹੋ ਚੁੱਕੇ ਨੇ ਅਤੇ 17 ਅਜੇ ਵੀ ਵਿਕਾਸधीन ਨੇ ਪਰ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਵਿਸਤਾਰ ਕੀਤੇ ਗਏ ਨੇ ਅਤੇ ਲੋਕ ਹੁਣ ਇਹ ਜਿਹੜੇ ਵਿਸਤਾਰ ਕਰਕੇ ਬਦਲਾਅ ਆਇਆ ਹੈ ਹੈਲਥ케ਅਰ ਵਿੱਚ ਇਹ ਜ਼ਰੂਰ ਮਹਿਸੂਸ ਕਰਨਗੇ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਜਿਹੜੇ ਇੰਟਰਨਲ ਮੈਡੀਸਨ ਬੈਡ ਕੈਪੈਸਿਟੀ ਉਸ ਨੂੰ ਤੋਂ ਹੁਣ 90 ਤੱਕ ਵਧਾ ਦਿੱਤਾ ਗਿਆ ਹੈ ਇਸ ਦੇ ਨਾਲ ਨਾਲ ਜਿਹੜੇ 75 ਇੰਟਰਨੈਸ਼ਨਲ ਐਜੂਕੇਟਿਡ ਨਰਸਸ 70 ਫਿਜ਼ੀਸ਼ੀਨ ਸੋ ਸਤਾਰਾ ਨਵੀਆਂ ਨਰਸਿੰਗ ਗ੍ਰੈਜੂਏਟ 164 এমপ্লয়েড ਸਟੂਡੈਂਟ ਨਰਸਸ ਨੂੰ ਰਿਕਰੂਟ ਕੀਤਾ ਗਿਆ ਹੈ ਅਤੇ ਉਸ ਤੋਂ ਲਗ ਸਿਕਿਉਰਿਟੀ ਵਾਸਤੇ ਵੀ 15 ਸਿਕਿਉਰਿਟੀ ਆਫਿਸਰਸ ਦੀ ਵੀ ਤਨਤੀ ਕੀਤੀ ਗਈ ਹੈ ਤਾਂ ਕਿ ਜੇਕਰ ਹਸਪੀਟਲ ਦੇ ਵਿੱਚ ਕੋਈ ਵਾਇਲੈਂਸ ਹੁੰਦਾ ਹੈ ਕੋਈ ਸੁਰੱਖਿਆ ਸੰਬੰਧੀ ਸਮੱਸਿਆ ਆਂਦੀ ਹੈ ਤਾਂ ਉਸ ਤੋਂ ਨਜਿੱਠਿਆ ਜਾ ਸਕੇ ਇੱਕ ਜਿਹੜੀ ਗੱਲ ਉਹਨਾਂ ਨੇ ਬੜੀ ਗਲੋਰੀਫਾਈ ਕੀਤੀ ਮਿਸਟਰ ਸਿਲ ਉਹ ਇਹ ਸੀਗਾ ਕਿ ਉਹਨਾਂ ਨੇ ਸਰੀ ਮੈਮੋਰੀਅਲ ਹਸਪੀਟਲ ਪੀਡੀਆਟ੍ਰਿਕ ਐਮਰਜੈਂਸੀ ਡਿਪਾਰਟਮੈਂਟ ਦੇ ਵੇਟਿੰਗ ਏਰੀਆ ਵਿੱਚ ਵਿਸਤਾਰ ਕੀਤਾ ਹੈ ਸੋ ਜਿਹੜਾ ਗੁਰੂ ਨਾਨਕ ਗੁਰਨਾਨਕ ਦੇਵ ਜੀ ਐਂਟਰੈਂਸ ਵਾਲਾ ਜ वेटिंग एरिया ਉਸਦੇ ਸੰਲਿਕ ਪੋਰਟੇਬਲ ਲੱਗਿਆ ਹੈ ਅਤੇ ਉਹ ਪੋਰਟੇਬਲ ਦੇ ਵਿੱਚ ਇੱਕ वेटिंग रूम ਉਸ ਨੂੰ ਬਣਾ ਦਿੱਤਾ ਗਿਆ ਹੈ ਉਹਨਾਂ ਅਨੁਸਾਰ ਇੱਥੇ ਲੋਕਾਂ ਨੂੰ ਮਦਦ ਮਿਲ ਸਕੇਗੀ ਪਰ ਇੱਕ ਗੱਲ ਸਮਝਣੀ ਹੈ ਕਿ ਦੋ वेटिंग ਹੋਵੇਗਾ ਅਤੇ ਉਸ ਤੋਂ ਬਾਅਦ ਕੀ ਜਾ ਕੇ ਡਾਕਟਰ ਕੋਲ ਵਾਰੀ ਆਏਗੀ ਸੋ ਜਿਹੜੀ ਇੱਕ ਚੀਜ਼ ਗਲੋਰੀਫਾਈ ਕੀਤੀ ਗਈ ਇਹ ਥੋੜੀ ਮੈਨੂੰ ਅਜੀਬ ਲੱਗੀ ਕਿਉਂਕਿ ਜਿੱਥੇ ਸਕੂਲਾਂ 'ਚ ਵੀ ਪੋਰਟੇਬਲ ਦਾ ਚਲਣ ਹੈਗਾ ਹੈ ਕਿ ਉਹਨਾਂ ਹਸਪਤਾਲ 'ਚ ਵੀ ਹੋਵੇਗਾ ਇਹ ਥੋੜੀ ਜੀ ਗੱਲ ਸਮਝ ਨਹੀਂ ਆਈ ਪਰ ਇਸ ਤੋਂ ਇਲਾਵਾ ਉਹਨੇ ਹੋਰ ਕਈ ਗੱਲਾਂ ਕਹੀਆਂ ਤੇ ਜਦੋਂ ਮੈਨੂੰ ਉਹਨਾਂ ਨੂੰ ਸਵਾਲ ਪੁੱਛਿਆ ਕਿ ਸਰੀ ਦੀ ਵੱਧਦੀ ਪੋਪੂਲੇਸ਼ਨ ਦੇ ਮੱਦੇਨਜ਼ਰ ਜਿਹੜੇ ਤੁਸੀਂ ਦੋ ਹਸਪੀਟਲ ਅਸੀਂ ਦੋ ਹਸਪੀਟਲ ਅਸੀਂ ਦੇਖ ਰਹੇ ਹਾਂ ਇੱਕ ਤੇ 2029 ਤੱਕ ਪੂਰਾ ਹੋਣ ਦੀ ਆਸ ਹੈ ਪਰ ਜਿਹੜੇ ਸਾਡੇ ਲਿਸਨਰਸ ਨੇ ਅਤੇ ਜਿਵੇਂ ਤੁਸੀਂ ਵੀ ਕਈ ਵਾਰੀ ਮੁੱਦਾ ਚੁੱਕਿਆ ਕਿ ਆਬਾਦੀ ਦੇ ਹਿਸਾਬ ਨਾਲ ਜਿਹੜੀ ਰੇਸ਼ਿਓ ਹੈ ਉਸ ਹਿਸਾਬ ਨਾਲ ਹੈਲਥ케ਅਰ ਫੈਸਿਲਿਟੀ ਨਹੀਂ ਕਿ ਤੁਸੀਂ ਕੋਈ ਛੇਤੀ ਤੁਰੰਤ ਕਾਰਵਾਈ ਨਹੀਂ ਕਰ ਸਕਦੇ ਉਸਤੇ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਗੱਲ ਸਮਝਦੇ ਆ ਅਸੀਂ ਅਤੇ ਉਮੀਦ ਕਰ ਰਹੇ ਨੇ ਕਿ ਛੇਤੀ ਤੋਂ ਛੇਤੀ ਜਿਹੜੀਆਂ ਸੁਧਾਰ ਕੀਤੇ ਜਾਣ ਅਤੇ ਉਹਨਾਂ ਨੇ ਇਹ सरकार ਸਰਕਾਰ सरते ਸਰਤੇ ਇੰਨਾ नहीं ਨਹੀਂ पर ਪਰ जरूर ਜ਼ਰੂਰ कि ਕਿ ਉਹਨਾਂ ਦੀ कोशिशा जारी ਕੋਸ਼ਿਸ਼ਾਂ ਜਾਰੀ ਨੇ ਅਤੇ ਉਹ ਆਬਾਦੀ ਦੇ ਹਿਸਾਬ ਨਾਲ ਸਰਰੀ ਨੂੰ ਉਸ ਦਾ ਲੋੜਿੰਦਾ ਜਿਹੜਾ ਹੱਕ ਹੈ ਉਹ ਇਸ ਮੌਕੇ ਮੇਰੇ ਵੈਂਡਲ ਆਫੀ ਮੌਜੂਦ ਸਨ ਮਿਸਟਰ ਚੰਦਰ ਤੇ ਮੈਂ ਉਹਨਾਂ ਦਾ ਪ੍ਰਤੀਕਰਮ ਵੀ ਲਿਆ ਇਸ ਸੰਬੰਧੀ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਨਿਰਾਸ਼ਾ ਜ਼ਾਹਿਰ ਕੀਤੀ ਮਿਸਟਰ ਨਾਲ ਲੋਕ ਗੱਲ ਕਰਦੇ ਰਹੇ ਤੇ ਜਿਹੜੇ ਰਿਐਕਸ਼ਨਸ से ਜਿਹੜੇ ਹਾਫ ਪਾਸ ਹਨ ਉਹ ਸਾਡੇ ਕੰਨਾਂ ਤੱਕ ਤੇ ਜਿਹੜੀ ਵਰਡਸ ਸਾਡੇ ਕੰਨਾਂ ਤੱਕ ਨਹੀਂ ਪਹੁੰਚੇ ਪਰ ਜਿਹੜੇ ਹਾਫ ਪਾਸ ਹਨ ਉਹਨਾਂ ਚ ਬਹੁਤੀ ਸਹਿਮਤੀ ਜਾਂ ਖੁਸ਼ੀ ਨਜ਼ਰ ਨਹੀਂ ਆ ਰਹੀ ਸੀ ਤੇ ਜਦੋਂ ਉਹਨਾਂ ਨੇ ਪ੍ਰਤੀਕਰਮ ਦਿੱਤਾ ਤਾਂ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਇਹ ਜਿਹੜਾ ਐਲਾਨ ਹੈ ਕੋਈ ਨਵਾਂ ਐਲਾਨ ਨਹੀਂ ਹੈ ਇਹ ਅਤੇ ਪਰ ਉਹਨਾਂ ਨੇ ਕਿਹਾ ਕਿ ਇਹ ਸਿਰਫ ਨਿਰਾਸ਼ਾਜਨਕ ਹੈ ਅਤੇ ਸਰੀ ਨੂੰ ਹਮੇਸ਼ਾ ਨਜ਼ਰਅੰਦਾਜ਼ੀ ਕੀਤਾ ਗਿਆ ਹੈ ਮੰਤਾ ਕਰਨ ਦੇ باوجود ਐਪਲੀਕੇਸ਼ਨ ਦੇਣ ਦੇ باوجود ਵੀ ਅਤੇ ਹੁਣ ਵੀ ਉਹਨਾਂ ਨੂੰ ਇਹੀ ਲੱਗ ਰਿਹਾ ਕਿ ਜਿਹੜੀ ਸਰੀ ਦੀ ਇਨਫਰਾਸਟ੍ਰਕਚਰ ਲੋੜ ਹੈ ਉਸ ਨੂੰ ਕਿਤੇ ਨਾ ਕਿਤੇ कल ਜਦੋਂ ਮੈਂ ਰਿਪੋਰਟਿੰਗ ਕਰਨ ਗਈ ਹਾਂ ਮੈਨੂੰ 30 ਮਿੰਟ ਲੱਗੇ ਨੇ ਇੱਕ ਪਾਰਕਿੰਗ ਸਪਾਟ जी, मरीजा दे के जो जा रहे है। तो मीडिया ਵਾਈ ਜਦੋਂ ਮੀਡੀਆ ਨੂੰ ਇੱਕ ਜਿਹੜਾ ਜਾਨਾ ਪੈਂਦਾ ਕਿ ਚਲੋ ਸਾਡਾ ਕੰਮ ਐਨਾ ਅਮਰਜੈਂਸੀ ਮਰੀਜ਼ਾਂ ਦੇ ਹਿਸਾਬ ਨਾਲ ਤਾਂ ਚਲੋ ਨਹੀਂ ਹੈ ਪਰ ਮਰੀਜ਼ਾਂ ਲੋਕੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਸਬੰਧੀ ਵੀ ਮਿਨਿਸਟਰ ਅਤੇ ਮੇਅਰ ਨੂੰ ਸਵਾਲ ਪੁੱਛੇ ਗਿਆ ਕਿ ਪਾਰਕਿੰਗ ਨੂੰ ਸੁਧਾਰਨ ਲਈ ਕਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਇਹ ਨਵੀਆਂ ਕੈਟਲੈਪਸ ਬਣ ਗਈਆਂ ਹੋਰ ਪੰਗੇ ਤਾਂ ਜਿਹੜੀ ਪਾਰਕਿੰਗ ਆਲੇ ਦੁਆਲੇ ਦੀ ਪਾਰਕਿੰਗ ਹੈ ਇਸ ਤੇ ਵੀ ਕੰਮ ਕੀਤਾ ਉੱਤੇ ਹੀ ਮੇਰ ਲੋਕ ਨੇ ਕਿਹਾ ਕਿ ਉਹ ਸਵੇਰੇ ਤੇ ਹੀ ਨਰਪਰ ਨੇ ਇਸ ਸੰਬੰਧੀ ਅਤੇ ਉਹ ਚਾਹੁੰਦੇ ਨੇ ਕਿ ਛੇਤੀ ਤੋਂ ਛੇਤੀ ਜਿਹੜੀ ਪਾਰਕਿੰਗ ਦੀ ਸਮੱਸਿਆ ਹੈ ਉਸ ਤੋਂ निजात ਪਾਈ ਜਾ ਸਕੇ ਹਾਲਾਂਕਿ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਸੋ ਪਾਰਕਿੰਗ ਦੀ ਸਮੱਸਿਆ ਤਾਂ ਜੇ ਪਤਾ ਨਹੀਂ ਪਰ ਜਿਹੜੇ ਇਹ ਐਲਾਨ ਸੀ ਇਹ ਇਸ ਬਾਰੇ ਇਹ ਅਪਡੇਟ ਦਿੱਤੇਗੇ ਮਿਸਟਰ ਥੈਂਕ ਮੰਤਰੀ ਨੂੰ ਸੈਕੰਡ ਟਾਵਰ ਬਣਾਉਣ ਬਾਰੇ ਕੋਈ ਪੁੱਛਿਆ ਨਹੀਂ ਕਿ ਤੁਸੀਂ ਮਰੀਜ਼ਾਂ ਨੂੰ ਹੋਟਲ ਦੇ ਵਿੱਚ ਹੋਟਲ ਦੇ ਵਿੱਚ ਰੱਖਣਾ ਚਾਹੁੰਦੇ ਹੋ ਸੈਕੰਡ ਟਾਵਰ ਲਈ ਥਾਂ ਪਈ ਹੈ ਡੇਰੀ ਕੋਈ ਦੇ ਨਾਲ ਉਹਨਾਂ ਨੇ ਕਿਹਾ ਕਿ ਜਿਹੜੀਆਂ ਯੋਜਨਾਵਾਂ ਨੇ ਕੁਝ ਪੋਲਿਟਿਕਸ ਨੇ ਕੁਝ ਯੋਜਨਾਵਾਂ ਨੇ ਉਸ ਸੰਬੰਧੀ ਗੱਲ ਕੀਤੀ ਜਾਵੇਗੀ ਜਿਵੇਂ ਤੁਹਾਨੂੰ ਵੀ ਪਤਾ ਹੈ ਮਿਸਟਰ ਮਿਸਟਰ ਮਿਸਟਰ ਸਿੰਘ ਬਿਲਕੁਲ ਸਹੀ ਸਪਸ਼ਟ ਜਵਾਬ ਕਦੇ ਵੀ ਨਹੀਂ ਮਿਲਦਾ ਕਿਸੇ ਮਿਨਿਸਟਰ ਨੂੰ ਜੇ ਤੁਸੀਂ ਸਪੈਸੀਫਿਕ ਗੱਲ ਸੋ ਉਹਨਾਂ ਨੇ ਇਹ ਕਿਹਾ ਕਿ ਹਾਂ ਇਹ ਤਰੀਕ ਹੋ ਰਹੇ ਨੇ ਹੋਰ ਕਾਰਵਾਈ ਸਰਕਾਰ ਪੂਰਾ ਕਰ ਰਹੀ ਹੈ ਹਮੇਸ਼ਾ ਜਿਹੜਾ ਦੇ ਵਿੱਚ ਦੁਖਭੰਜਨ ਕਿਡਨੀ ਵਾਰਡ ਚਲਾਏ ਨੇ ਜੀ ਬਿਲਕੁਲ ਇੱਕ ਬੈਡ ਵਧਾਈ ਨੇ ਉਹਨਾਂ ਨੇ ਕਹਿੰਦੇ ਕਿ ਰਿਕਰੂਟਮੈਂਟ ਹੋਰ ਕੀਤੀ ਗਈ ਹੈ ਫਿਜ਼ੀਸ਼ੀਅਨਸ ਦਾ ਫਿਰ ਰਿਕਰੂਟ ਕੀਤੇ ਗਏ ਨੇ ਮਸ਼ੀਨਾਂ ਵਧਾਈਆਂ ਗਈਆਂ ਨੇ ਛੋਟੇ ਛੋਟੇ ਉਹਨਾਂ ਨੇ ਕਈ ਡਿਟੇਲਸ ਦਿੱਤੀਆਂ ਵਿੱਚ ਕਿ ਜਿਹੜੀਆਂ ਪਹਿਲਾਂ ਨਹੀਂ ਸੀਗੀਆਂ ਜਿਹੜੇ ਇੱਕ ਮੁੱਦਾ ਸੀ ਟੀ ਸਕੈਨ ਦਾ ਸੀਗਾ ਜਦ 6 ਘੰਟੇ ਬੰਦ ਰਿਹਾ ਉਹ ਵੀ ਇੱਕ ਮੀਡੀਆ ਨੇ ਚੱਕਿਆ ਅਤੇ ਉਹਨਾਂ ਨੇ ਕਿਹਾ ਕਿ 6 ਘੰਟੇ ਸਰਵਿਸਿਜ਼ ਬੰਦ ਰਹੀਆਂ ਪੇਸ਼ੈਂਟਸ ਨੂੰ ਕਾਫੀ ਦਿੱਕਤਾਂ ਦਰਪੇਸ਼ ਆਈਆਂ ਇਸ ਸੰਬੰਦੇ ਉਹਨਾਂ ਦਾ ਕੀ ਕਹਿਣਾ ਤਾਂ ਉਹਨਾਂ ਨੇ ਕਿਹਾ ਕਿ ਇਹ ਇੱਕ ਮਲ ਫੰਕਸ਼ਨ ਸੀ ਜਿਸ ਕਰਕੇ ਪ੍ਰੋਬਲਮ ਆਈ ਹੈ ਪਰ ਤੁਸੀਂ ਇਹ ਵੀ ਦੇਖੋ ਕਿ ਮਸ਼ੀਨਾਂ 24 24 ਘੰਟੇ ਦੀ ਕੰਮ ਕਰਦੀਆਂ ਨੇ ਅਤੇ ਮਰੀਜ਼ਾਂ ਨੂੰ ਇਸ ਸੰਬੰਧੀ ਸਹੂਲਤਾਂ ਮਿਲਦੀਆਂ ਨੇ ਇਹ ਇੱਕ ਜਿਹੜੀ ਕਮੀ ਸੀ ਇਸ ਦੂਰ ਕੀਤਾ ਗਿਆ ਹੈ ਅਤੇ ਉਮੀਦ ਕਰਦੇ ਨੇ ਕਿ ਅਗੋਂ ਅਜਿਹੀਆਂ ਕਮੀਆਂ ਨਹੀਂ ਆਉਣਗੀਆਂ ਸੋ ਇਸ ਤਰ੍ਹਾਂ ਦੇ ਕੋਈ ਜਵਾਬ ਉਹਨਾਂ ਨੂੰ ਦਿੱਤੇ ਗਏ ਉਹ ਜਿਹੜੀ ਸੀਟੀ ਸਕੈਨ ਮਸ਼ੀਨ ਸੰਬੰਧੀ ਮਿਸਟਰ ਠੀਕ ਹੈ ਜੀ ਬਹੁਤ ਬਹੁਤ ਉੱਥੇ ਜਿਹੜੇ ਹੋਰ ਕੌਣ ਕੌਣ ਸੀ ਡਾਕਟਰਸ ਤੇ ਹਸਪੀਟਲ ਦਾ ਸਟਾਫ ਸੀ ਹਸਪੀਟਲ ਦਾ ਸਟਾਫ ਮੌਜੂਦ ਸੀ ਸਰੀ ਡੈਂਟਲੋਗ ਮੌਜੂਦ ਸਨ ਡਾਕਟਰ ਵਿਕਟੋਰੀਆ ਲੀ ਜਿਵੇਂ ਜਾਂਦੇ ਸੀ ਉਹ ਹੈਗੇ ਨੇ ਉਹ ਮੌਜੂਦ ਸਨ ਹੋਰ ਵੀ ਮੌਜੂਦ ਜ਼ਰੂਰ ਮੌਜੂਦ ਸਨ ਉਹਨਾਂ ਦਾ ਸਟਾਫ ਮੌਜੂਦ ਸੀ ਕਾਫੀ ਹੋਰ ਡਾਕਟਰਸ ਮੌਜੂਦ ਸਨ ਔਰ ਪਰ ਮੀਡੀਆ ਵੀ ਕਾਫੀ ਮੌਜੂਦ ਸੀ ਪਰ ਹੋਰ ਕੋਈ ਇਸ ਤਰ੍ਹਾਂ ਦੀ ਸ਼ਿਰਕਤ ਨਹੀਂ ਸੀ ਬਹੁਤ ਮਿਹਰਬਾਨੀ ਸ਼ੁਕਰੀਆ ਸ਼ੁਕਰੀਆ ਅ ਕਾਮਰਾ ਸਾਡੇ ਫੀਲਡ ਰਿਪੋਰਟਰ ਨੇ ਜਿਹੜੀ ਰਿਪੋਰਟ ਦੇ ਰਹੇ ਸਨ ਕੱਲ ਸੋਰੀ ਮੋਰ ਦੇ ਦੇ ਦੁਖਪੰਚਨ ਕਿਡਨੀ ਵਾਰਡ ਦੇ ਵਿੱਚ ਇਹ ਬੈਡਸ ਦਾ ਐਡ ਕਰ ਦਿੱਤੇ ਗਏ ਨੇ ਪਰ ਹਾਲੇ ਤੱਕ ਹੋਰ ਕੋਈ ਗੱਲ ਨਹੀਂ ਕੀਤੀ ਗਈ ਸਗੋਂ ਇੱਕ ਪੋਰਟੇਬਲ ਵੇਟਿੰਗ ਰੂਮ ਜ਼ਰੂਰ ਮੇਰੇ ਖਿਆਲ ਆ ਪੱਕੇ ਤੌਰ ਤੇ ਉੱਥੇ ਰਹੇਗਾ ਜਿਸ ਨੂੰ ਮੰਤਰੀ ਨੇ ਮੋਹਰ ਲਾ ਦਿੱਤੀ ਹੈ ਤੇ ਉਸ ਪ੍ਰਸ਼ੰਸਾ ਕਰ ਦਿੱਤੀ ਹੈ ਤੋੜਾ ਕੀ ਖਿਆਲ ਹੈ ਜੇ ਬਰੇਚ ਜਿਹੜੀ ਹੁਣ ਡਾਕਟਰਾਂ ਦੀ ਹੁਣ ਹੋਰ ਹਾਇਰਿੰਗ ਹੋ ਰਹੀ ਹੈ ਉਹਨਾਂ ਨੇ ਕਿਹਾ ਤੁਸੀਂ ਹੋਰ ਡਾਕਟਰ ਹਾਇਰ ਕੀਤੇ ਨੇ ਅਤੇ ਡਾਕਟਰਾਂ ਨੂੰ ਦੇ ਪੈਸੇ ਵਧਾਏ ਨੇ ਐਮਰਜੈਂਸੀ ਚ ਕੰਮ ਕਰਨ ਵਾਲੇ ਡਾਕਟਰਾਂ ਨੂੰ ਉਹ 500 ਡਾਲਰ ਬੋਨਸ ਦੇ ਰਹੇ ਨੇ ਜਾਂ 3200 ਡਾਲਰ ਸ਼ਿਫਟ ਦਾ ਦੇ ਰਹੇ ਨੇ ਇਸ ਦੇ ਨਾਲ ਤੁਸੀਂ ਫਰਕ ਮਹਿਸੂਸ ਕਰਦੇ ਹੋ ਹੈਲਥ케ਅਰ ਦੇ ਵਿੱਚ ਜਿਹੜੇ ਵੀ ਲੋਕ ਜਾਂਦੇ ਆ ਉਹ ਕਹਿੰਦੇ ਕਿ ਨਰਸਾਂ ਤੇ ਡਾਕਟਰ ਅਸੀਂ ਹੋਰ ਹਾਇਰ ਕੀਤੇ ਹਨ ਤੁਸੀਂ ਜਾਣਦੇ ਹੋ ਜਾਂ ਤੋੜਾ ਆਪਣਾ ਤਜਰਬਾ ਹੈ ਕਿ ਹੈਲਥ케ਅਰ ਸਰਵਿਸਿਜ਼ ਦੇ ਵਿੱਚ ਸਰੀ ਦੇ ਵਿੱਚ ਕੁਝ ਇੰਪਰੂਵਮੈਂਟਸ ਪਾਈਆਂ ਗਈਆਂ ਨੇ ਕਿਉਂਕਿ ਆਪਾਂ ਸ਼ਿਕਾਇਤ ਕਰਦੇ ਰਹੇ ਨੇ ਆ ਤੇ ਨੇ ਕਿਹਾ ਕਿ ਹੁਣ ਅਸੀਂ ਇਹਦੇ ਵਿੱਚ ਕਿੰਨੇ ਡਾਕਟਰ ਤੇ ਨਰਸਾਂ ਹਾਇਰ ਕੀਤੀਆਂ ਨੇ ਤਿੰਨਾ ਨਵਾਂ ਇਕਵਿਪਮੈਂਟ ਜਿਹੜਾ ਉਹ ਲਾਇਆ ਗਿਆ ਹੈ ਤੇ ਖਾਸ ਤੌਰ ਤੇ ਕਿਡਨੀ ਦੇ ਏਰੀਆ ਦੇ ਵਿੱਚ 21 ਬੈਡਸ ਹੋਰ ਲਾਏ ਗਏ ਨੇ ਦੇਖੋ ਅਸੀਂ ਸ਼ਿਕਾਇਤ ਕਰਦੇ ਰਹਿੰਨੇ ਜੇ ਜਿਹੜੀ ਇੰਪਰੂਵਮੈਂਟ ਹੁੰਦੀ ਹੈ ਉਹ ਰੈਕੋਗਨਾਈਜ਼ ਨਾ ਕਰੀਏ ਇਹ ਵੀ ਗਲਤ ਗੱਲ ਹੋਏਗੀ ਜਿਹੜੀ ਮਿਨਿਸਟਰੀ ਆਫ ਹੈਲਥ ਨੇ ਜੇ ਹੋਰ ਡਾਕਟਰ ਤੇ ਹੈਲਥ ਕੇਅਰ ਵਰਕਰਸ ਹਾਇਰ ਕੀਤੇ ਨੇ ਤਾਂ ਉਹ ਡੈਫੀਨਿਟਲੀ ਸਰਵਿਸਸ ਦੇ ਵਿੱਚ ਰਿਫਲੈਕਟ ਕਰੇਗੀ 604 599 9311 ਸਾਡਾ ਟੈਲੀਫੋਨ ਨੰਬਰ ਹੈ ਇਹ ਮਿਨਿਸਟਰੀ ਨੇ 3 ਐਕਸ਼ਨ ਪਲਾਨ ਜਿਹੜਾ 30 ਐਕਸ਼ਨ ਪਲਾਨ ਮਿਨਿਸਟਰੀ ਆਫ ਹੈਲਥ ਨੇ ਤੇ ਇਹ ਸ਼ੁਰੂ ਕੀਤਾ ਹੈ ਇਸ ਦੀ ਪ੍ਰੋਗਰੈਸ ਤੁਸੀਂ ਸਭ ਤੋਂ ਬੈਟਰ ਜਾਣਦੇ ਹੋ ਕਿਉਂਕਿ ਜਦੋਂ ਤੁਹਾਨੂੰ ਸੇਵਾਵਾਂ ਨਹੀਂ ਮਿਲਦੀਆਂ ਜਦੋਂ ਅਸੀਂ ਉੱਥੇ ਮਰੀਜ਼ ਦੇ ਤੌਰ ਤੇ ਜਾਂਦੇ ਹਾਂ ਹੁਣ ਉਹ ਕਹਿੰਦੇ ਕਿ ਇੱਥੇ ਸਟੇਟ ਆਫ ਦਿ ਆਰਟ ਇਕੁਪਮੈਂਟ ਲਾ ਦਿੱਤਾ ਗਿਆ ਹੈ ਕਿਡਨੀ ਡਿਪਾਰਟਮੈਂਟ ਦੇ ਵਿੱਚ ਕਿ ਕਿਡਨੀ ਸਾਫ਼ ਕਰਨ ਲਈ 2190 ਬੈਡਸ ਉੱਥੇ ਚਾਲੂ ਹੋ ਜਾਣਗੇ ਤੇ ਟੋਟਲ ਗਿਣਤੀ ਹੁਣ 60 ਨਹੀਂ ਹੋ ਜਾਏਗੀ ਬਹੁਤ ਸਾਰੇ ਲੋਕ ਡਾਇਲਿਸਿਸ ਕਰਾਉਣ ਆਉਂਦੇ ਆ ਤੇ ਇਸ ਨੂੰ ਇੰਟਰਨਲ ਮੈਡੀਸਨ ਬੈਡ ਕੈਪੈਸਿਟੀ ਜਿਹੜੀ ਆ ਉਹ ਹੁਣ ਵਧਾ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਅਸੀਂ ਚਾਈਲਡ ਜੀ ਯੂਥ ਮੈਂਟਲ ਹੈਲਥ ਐਮਰਜੈਂਸੀ ਰਿਸਪੌਂਸ ਟੀਮ ਵੀ ਸਰੀਮੋਰਲ ਹਸਪੀਟਲ ਦੇ ਵਿੱਚ ਤੇ ਫਰੇਜ਼ਰ ਦੇ ਸੌਥ ਦੇ ਵਿੱਚ ਵਧਾਰੇ ਹੇ ਹਾਂ। ਔਰ ਉਹਨਾਂ ਨੇ ਕਿਹਾ ਕਿ 15 ਸਿਕਿਉਰਿਟੀ ਆਫੀਸਰ ਅਸੀਂ ਵਾਦੂ ਲਾਏ ਆਏ ਥੇ ਜਿਹੜੇ ਹੁਣ ਨਵੇਂ ਪਰਤੀ ਕੀਤੇ ਜਿਹੜੇ ਸਰੀਮੋਰਲ ਹਸਪੀਟਲ ਦੇ ਵਿੱਚ ਵੇਖਣਗੇ ਕਿ ਸੇਫਟੀ ਤੇ ਸਿਕਿਉਰਿਟੀ ਬਾਕੀ ਦਾ ਤੌਰ ਤੇ ਰੱਖੀ ਜਾਇ ਸਟਾਫ ਦੀ ਵੀ ਤੇ ਮਰੀਜ਼ਾਂ ਦੀ ਵੀ ਤੇ ਉਹ ਕਹਿੰਦੇ ਕਿ ਕਲੀਨਿਕਲ ਅਸੋਸੀਏਟਸ ਰੱਖੇ ਨੇ ਸੀ 21 ਨਵੇਂ ਤੇ 75 ਇੰਟਰਨੈਸ਼ਨਲੀ ਐਜੂਕੇਟਿਡ ਨਰਸਸ ਲੈ ਕੇ ਆਉਂਦੀਆਂ ਨੇ ਸੋਰੀ ਮੈਮੋਰੀਅਲ ਹਸਪੀਟਲ ਦੇ ਵਿੱਚ 75 ਨਵੀਆਂ ਨਰਸਸ ਲਿਆਂਦੀਆਂ ਜਿਹੜੀਆਂ ਕੈਨੇਡਾ ਦੇ ਵਿੱਚ ਟ੍ਰੇਨਡ ਨਹੀਂ ਹੋਈਆਂ ਸਗੋਂ ਬਾਹਰਲੇ ਮੁਲਕਾਂ 'ਚ ਟ੍ਰੇਨਡ ਹੋਈਆਂ ਨੇ ਤੇ 70 ਨਵੇਂ ਡਾਕਟਰ ਸਰੀ ਮਮਰ ਦੇ ਵਿੱਚ ਉਹ ਕਹਿੰਦੇ ਅਸੀਂ ਭਰਤੀ ਕੀਤੇ ਆ ਨਾਲ ਤੇ 75 ਨਰਸਾਂ ਨਾਲ 21 ਕਲੀਨਿਕਲ ਅਸੋਸੀਏਟਸ ਨਾਲ ਫਰਕ ਤੇ ਪੈਣਾ ਚਾਹੀਦਾ ਕੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਮੈਂ ਦੱਸਣਾ ਚਾਹੁੰਦਾ ਸੀਗਾ ਵੀ ਵਾਕਈ ਜਿਹੜਾ ਸਰੀ ਦਾ ਸਿਸਟਮ ਹੈ ਬੜਾ ਇਹਨਾਂ ਨੇ ਇਹਨਾਂ ਨੂੰ ਕੋਈ ਗੌਰ ਨਹੀਂ ਕਰ ਰਿਹਾ ਅ बिकॉज ਜੇ ਆਪਾਂ ਕੰਪੇਅਰ ਕਰਦੇ ਆਂ ਵੈਨਕੂਵਰ ਟੂ ਸਰੀ ਵੈਨਕੂਵਰ 6 ਲੱਖ 34 ਦੀ ਪਪੂਲੇਸ਼ਨ 6 3000 ਬੈਡ ਮਗਰ ਉਹਨਾਂ ਦੇ ਤੇ ਆਪਣਾ 6 ਲੱਖ 6 ਲੱਖ 70 ਦੀ ਪਪੂਲੇਸ਼ਨ ਸਰੀ ਦੇ ਵਿੱਚ ਤੇ ਸਿਰਫ ਆਪਣੇ 600 ਬੈਡ ਕਿੰਨਾ ਅੱਧ ਦੇ ਵਿੱਚ ਵੀ ਹੈ ਨਹੀਂ ਅਸੀਂ ਜੀ ਔਰ ਇਸ ਵੱਲੇ ਜਿਹੜੀ ਐਮਰਜੈਂਸੀ ਦੀ ਸਿਚੁਏਸ਼ਨ ਹੈ ਤੁਸੀਂ ਕੋਈ ਵੀ ਦੇਖ ਲਓ ਐਮਰਜੈਂਸੀ ਵੇਟਿੰਗ ਟਾਈਮ ਦੇ ਵਿੱਚ ਪਾ ਕੇ ਸਰੀ ਦੀ ਨੰਬਰ 1 ਮੀਟਿੰਗ ਹੁੰਦੀ 8 ਤੋਂ 10 ਘੰਟੇ ਦੀ ਬੇਟੀ ਔਰ ਇਹਨਾਂ ਕੋ ਸਰੀ ਮੋਡਰਨ ਹਸਪੀਟਲ ਕੋਸਰਫ ਐਮਰਜੈਂਸੀ ਵਿੱਚ 10 ਡਾਕਟਰਸ ਰਹਿੰਦੇ ਨੇ ਐਨਾ ਚੀਜ਼ ਹੈਗੀ ਆ ਮੇਰੇ ਮਦਰ ਆਪ ਉੱਥੇ ਹਸਪੀਟਲ ਐਡਮਿਟ ਨੇ ਮੈਂ ਵੀ ਸਟਿਲ ਹਜੇ ਹਸਪੀਟਲ ਹੀ ਜਾ ਰਿਹਾ ਬਲੂਟース ਤੇ ਵਿੱਚ ਗੱਲ ਕਰਦੇ ਫੋਨ ਤੇ ਲਾਸਟ 10 ਦਿਨਾਂ ਤੋਂ ਹਸਪੀਟਲ ਨੇ ਉੱਥੇ ਹੁਣ ਹਸਪੀਟਲ ਜੇ ਚੈੱਕ ਕਰਦੇ ਆ ਪੇਸ਼ੈਂਟ ਨੂੰ ਚੈੱਕ ਕਰਕੇ ਆ ਕਿ ਜਾਂਦੇ ਵੀ ਜੇ ਕਿਸੇ ਦਾ ਬੀਪੀ ਵੱਧ ਸ਼ੂਗਰ ਵੱਧ ਆ ਦਵਾਈ ਦਿੰਦੇ ਆ ਉਹ ਕਹਿੰਦੇ ਅਸੀਂ ਆ ਰਹੇ ਆ ਦਵਾਈ ਲੈਣ ਆ ਰਹੇ ਆ ਤੁਸੀਂ ਵੇਟ ਕਰੀ ਜਾਓ ਉਹਨਾਂ ਨੂੰ ਦਵਾਈ ਦੇ ਰਹੇ ਆ ਦੇ ਰਹੇ ਆ ਦੇ ਰਹੇ ਆ ਜੇ ਉਹਨਾਂ ਨੂੰ ਦੁਬਾਰਾ ਰਿਕੁਐਸਟ ਕਰੋ ਵੀ ਤੁਸੀਂ ਪੇਸ਼ੈਂਟ ਨੂੰ ਦੇਖ ਕੇ ਗਏ ਸੀਗੇ ਵੀ ਤੁਸੀਂ ਪਲੀਜ਼ ਦਵਾਈ ਦੇ ਦਿਓ ਫਿਰ ਉਹਨਾਂ ਦਾ ਜਿਹੜਾ ਬਿਹੇਵੀਅਰ ਆ ਜਾਂ ਉਹਨਾਂ ਦਾ ਉਹ ਚੀਜ਼ ਆ ਫਿਰ ਉਹ ਵੀ ਉਹਨਾਂ ਦਾ ਐਨਾ ਹੈਗਾ ਫਿਰ ਬੰਦਾ ਕਹਿੰਦਾ ਯਾਰ ਕੀ ਕਰੀਏ ਯਾਰ ਹੁਣ ਪੇਸ਼ੈਂਟ ਵੀ ਆਪਣਾ ਹੁੰਦਾ ਉੱਥੇ ਤੇ ਉਹ ਵੀ ਹੁੰਦੇ ਉਸ ਚੀਜ਼ ਨੂੰ ਵੀ ਉਹਨਾਂ ਕੋਲ ਸਟਾਫ ਹੀ ਹੈ ਨਹੀਂ ਉਹ ਚੀਜ਼ ਤੇ ਐਨਾ ਲੋਡ ਆ ਕੰਮ ਦਾ ਉੱਥੇ ਇਹਨਾਂ ਨੂੰ ਇਹ ਜਿਹਨੇ ਵੀ ਸਾਡੇ ਇੱਥੇ ਦੇ ਪੋਲੀਟਿਸ਼ੀਅਨਸ ਨੇ ਐਮਐਲਏ ਆ ਆਪਾਂ ਸਾਰੀਆਂ ਬੜੀਆਂ ਬੜੀਆਂ ਇੱਥੇ ਮੀਟਿੰਗਸ ਕਰਦੇ ਆਂ ਬੜੇ ਬੜੇ ਇਕੱਠ ਖੜੇ ਕਰ ਲੰਨੇ ਆਂ ਅਸੀਂ ਇੱਥੇ ਕਰ ਲੰਨੇ ਆਂ ਪਰ ਕੋਈ ਵੀ ਕਦੀ ਸਵਾਲ ਨਹੀਂ ਕਰਦਾ ਇਹਨਾਂ ਚੀਜ਼ਾਂ ਨੂੰ ਹੁਣ ਬਰਨਵੀ ਹਸਪਤਾਲ ਕਿੰਨਾ بڑا ਹਸਪਤਾਲ ਬਣ ਚੱਕਾ ਜੀ ਉਹ ਤੇ ਉਹ ਇਸ ਤਰੀ ਸਰੀ ਨੂੰ ਐਡੀ ਪਾਪੂਲੇਸ਼ਨ ਬਾਗਰੀ ਹੈ ਔਰ ਸਕੂਲ ਸਿਸਟਮ ਇਹਨਾਂ ਦਾ ਆਪਣਾ ਐਜੂਕੇਸ਼ਨ ਸਿਸਟਮ ਹੁਣ ਜਦੋਂ ਵੀ ਇਹਨਾਂ ਦੇ ਵੋਟਸ ਹੁੰਦੇ ਆ ਜਾਂ ਇਹ ਜਰੂਰ ਮੈਂ ਇਹਨਾਂ ਨੂੰ ਸੁਣਨ ਵਾਲਿਆਂ ਨੂੰ ਕਹਿਣਾ ਚਾਹਣਾ ਕਿ ਆਪਣੇ ਉਹਨਾਂ ਨੂੰ ਸਵਾਲ ਕਰੋ ਇਹਨਾਂ ਦੀ ਪਾਰਟੀਆਂ ਜਾਂ ਸਮੋਸੇ ਚਾਹ ਖਾਨ ਨੂੰ ਇਹ ਚੀਜ਼ਾਂ ਨਾਲ ਦਿਓ ਏਟਲੀਸਟ ਤੁਸੀਂ ਸਵਾਲ ਕਰੋ ਕਿਉਂ ਸਾਡੇ ਆਪਣੇ ਪੇਰੈਂਟਸ ਵੀ ਐ ਬੱਚੇ ਵੀ ਜਦੋਂ ਹਸਪੀਟਲ ਜਾਂਦੇ ਆ ਤਾਂ ਉਸ ਵੇਲੇ ਅਸੀਂ ਫੇਸ ਕਰਦੇ ਉਹਨਾਂ ਚੀਜ਼ਾਂ ਨੂੰ ਜਿਹੜੀ ਮੈਚਸ ਐਸ ਵੇਲੇ ਫੇਸ ਜਿਸ ਤੋਂ ਮਿਨਿਸਟਰ ਨੇ ਦੱਸਿਆ ਕਿ ਉਹਨਾਂ ਨੇ 70 ਨਵੇਂ ਡਾਕਟਰ ਰੱਖਿਆ 75 ਇੰਟਰਨੈਸ਼ਨਲ ਐਜੂਕੇਟਿਡ ਨਰਸਸ ਰੱਖੀਆਂ 21 ਨਵੇਂ ਕਲੀਨिकल ਐਸੋਸੀਏਟ ਰੱਖਿਆ ਔਰ ਇਹਦੇ ਨਾਲ ਕਹਿੰਦੇ ਕਿ 117 ਨਰਸਿੰਗ ਗ੍ਰੈਜੂਏਟਸ ਨੇ ਜਿਹੜੇ ਜਿਨ੍ਹਾਂ ਚੋਂ 164 ਸਟੂਡੈਂਟ ਨਰਸਸ ਨੇ ਉੱਥੇ ਸ੍ਰੀਮੌਰ ਹਸਪੀਟਲ 'ਚ ਕੰਮ ਕਰਦੀਆਂ ਨੇ ਸੋ ਚਲੋ 15 ਸਿਕਿਉਰਿਟੀ ਆਫੀਸਰ ਦੀ ਗੱਲ ਛੱਡੋ ਬਾਕੀ ਨਰਸਾਂ ਤੇ ਡਾਕਟਰਸ ਦੀ ਗਿਣਤੀ ਤਾਂ ਬਹੁਤ ਵੱਡੀ ਜਿਹੜੀ ਮਿਨਿਸਟਰ ਨੇ ਦੱਸੀ ਆ ਉਹਦੇ ਨਾਲ ਐਕਸਪੈਂਡ ਹੋਈ ਐ ਤੁਸੀਂ ਕੋਈ ਜੀ ਅ ਠੀਕ ਹੈ uh david eviano uh, the whole ndp yeah, the, uh, council was there mm -hmm. and that what i want to raise is that there is a lot of uh, uh, you know with the uh, relaxation on on the doctors hiring of them there's a lot of quacks that are coming into the system they are not even doctors okay so they have to have some sort of uh, a system in there that to weed them out and the other thing i see is that there's a lot of uh, snake oil sellers around here which are medical or whatever you call them compounders what do you mean we jade unho ne doctor hire kite no oh doctor nahi hege not not all of them they are quacks really sir there neem hakima sir in the hospital de vich kayi ohna de vich neem hakima i don't know if they are working in the hospital or not but they're calling them up a doctor but the policy has to be that there should be some sort of a gatekeeping or something you know to weed them out this is this is not uh, i'm not just making up there are a lot of potential they are bringing in mm -hmm. i don't know which university they belong to but it's happening thank you thank you very much uh, hold on hello anji ek clear karke jao kyuki ਹੈਲੋ ਜਿਹੜੀ ਤੁਸੀਂ ਦੱਸਿਆ ਕਿ ਜਿਹੜੇ ਉਹਨਾਂ ਨੇ ਡਾਕਟਰ ਭੜਤੀ ਕੀਤੇ ਆ ਉਹ ਕੋਐਕਸ ਨੇ ਜਾਂ ਸਨੇਕ ਵੇਲ ਸੈਲਰਸ ਨੇ ਜਾਂ ਉਹ ਪੂਰੀ ਤਰ੍ਹਾਂ ਟ੍ਰੇਨਡ ਨਹੀਂ ਤੌਰ ਤੇ ਮੈਡੀਕਲ ਡਾਕਟਰ ਨਹੀਂ ਹੈਗੇ ਮੇਰਾ ਖਿਆਲ ਐਮਡੀ ਤੋਂ ਘੱਟ ਦੌਰ ਰੱਖਦੇ ਨਹੀਂ so when when they used to have the uh, before right they used to have a, a test and all that now what is happening i think they have relaxed the, those uh, uh, you know you, they just check the credentials or whatever and uh, there is a lot of infiltration uh, of uh, the, the, what i'm calling the, you know untrained or they are not trained i don't consider them as a doctors but they're calling themselves a doctor ਔਰ ਆਪਣੇ ਆਪ ਨੂੰ ਡਾਕਟਰ ਤੇ ਨਹੀਂ ਕਹਿ ਸਕਦੇ ਜੇ ਉਹ ਇੱਥੇ ਰੈਕੋਗਨਾਈਜ਼ਡ ਡਾਕਟਰ ਨੇ ਤੁਹਾਡੇ ਇਸ ਗੱਲ ਨਾਲ ਜਿੰਨੀ ਦੇਰ ਤੱਕ ਉਹ ਕਰਦੇ ਉਹਨਾਂ ਕਰਦੇ ਭਾਜੀ ਇਹ ਇਹ ਦਿਸ ਇਸ ਦਿਸ ਇਸ ਤੁਸੀਂ ਮੈਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਤੁਹਾਡਾ ਇਸ਼ਾਰਾ ਜਿਹੜੇ ਫੋਰਨ ਟ੍ਰੇਨ ਡਾਕਟਰ ਆ ਰਹੇ ਆ ਬਾਹਰਲੇ ਦੂਸਰੇ ਮਲਕਾਂ ਤੋਂ ਜਾਂ ਆਇਲੈਂਡਸ ਤੋਂ ਉਹਨਾਂ ਦੀ ਗੱਲ ਕਰਦੇ ਹੋ ਜਾਂ ਤੁਸੀਂ ਗੱਲ ਕਰਦੇ ਹੋ ਜਿਹੜੇ